ਸੋ ਕਰ ਕਰ ਸਵਾਹੋ ਤਾ ਹੂੰ ਖਰਾ ਖਰਾ ਸਵਾਹੋ ਤਾ ਦੋ ਖੇਮੇ ਉਨੇ ਸਭਰ ਪਰ ਖਰਾ ਸੱਚ ਹੈ ਖਰਾ ਸੱਚੇ ਲੋ ਜੋ ਸੱਚੋ ਸੱਚ ਹੈ ਖਰਾ ਖਰਾ ਸੱਚੋ ਸੱਚ ਹੈ ਜੋ ਬੋਦੀ ਉਸਤਿ ਰਾਈਂ ਖਰਾ ਹੈ ਜਿਹੜਾ ਵਾਕਿਆ ਹੀ ਸੱਚ ਹੈ ਵਾਕਿਆ ਹੀ ਖਰਾ ਹੈ ਉਹਦੀ ਸਿਰਾਂ ਕਰੋ ਕੋਟੇ ਦੀ ਸਿਰਾਂ ਨਾ ਕਰੋ ਸਰਾਹਤ ਆਹੂ ਜੋ ਖੇਨ ਵਿੱਚ ਝੂਨੇ ਸੁਭਰ ਪਰ ਆਹੂ ਸੁਭਰ ਪਰ ਜਿਹੜਾ ਊੜਿਆਂ ਨੂੰ ਖੇਡ ਦੇ ਵਿੱਚ ਪੂਰਾ ਵਰਦਵੇ ਗੁਰੂ ਨਾਨਕ ਦਾਸ ਵੀ ਕਿਸੇ ਦੀ ਕੋਈ ਕਮਨੀ ਹੋਵੇ ਗੱਲ ਉਡੀਓ ਦੂਰ ਕਰ ਬਵੇਕ ਜਿਹੜਾ ਹੈ ਬਵੇਕ ਬੁੱਧੀ ਸਾਰੀ ਹਮਤ ਖਾਲੀ ਕਬੂ ਦੂਰ ਕਰ ਰਹੀ ਹੈ ਜਿੱਥੇ ਵੀ ਕਿਸੇ ਦਾ ਚੰਗੀ ਕਬੂ ਉੱਥੇ ਹੀ ਦੱਸ ਕੇ ਜੇ ਤੇ ਪੂਰੀ ਗੱਲ ਪੂਰੀ ਗੱਲ ਵਾਸਤੇ ਉਹ ਟਿੱਪੜੀ ਕਰ ਰਹੀ ਹੈ ਰਿੰਦਿਆ ਵਾਸਤੇ ਟਿੱਪੜੀ ਦੀ ਕਰ ਡਾਕਟਰ ਜੀ ਦੱਸਦਾ ਵੀ ਭਾਈ ਤਾਂ ਆ ਚੀਜ਼ ਹੀ ਖਲੀਫ ਇਹ ਹੋ ਗਈ ਤੇਰੇ ਨਾਲ ਕਟੜਾ ਤਾਂ ਤੇਰੇ ਨੂੰ ਵਾਰੀ ਲੱਗ। ਥੋੜੇ ਇਹਦਾ ਰਾਹ ਆ। ਆ ਤਾਂ ਪਰਹੇਜ਼ ਰੱਖਣਾ। ਥੋੜੀ ਜਿਹਾ ਪਰਹੇਜ਼ ਰੱਖਿਆ ਆ ਤੈਨੂੰ ਪਤਾ ਹੈਗੀ ਸੀ। ਉਹ ਦਿਨ ਤੇ ਥੋੜੀ ਕਰਦੇ ਨਾਲ। ਪਾਜੂ ਦੀ ਗਿਆਨਤਾ ਬਾਰੇ ਦੱਸ ਰਿਹਾ ਡਾਕਟਰ। ਜੇ ਉਹ ਪਤਾ ਹੁੰਦਾ ਵੀ ਇਹ ਬੜਰ ਬੇਰਾਂ 20 ਬੁੱਢੂ ਕੇ ਖਤਮ। ਕੱਕਾ ਡਾਕਟਰ ਲੱਗ ਰਿਹਾ ਉਹ ਕੋਈ ਉਹ ਦੀ ਚੈਕ ਕਰ ਰਿਹਾ ਉਹ ਲੋਕਾਂ ਨੂੰ ਸਭ ਚਾਗਰਤ ਕਰ ਉਹਨੂੰ ਅਲਰਟ ਕਰ ਹਾਂ ਉਹਦਾ ਫਾਇਦਾ ਕਰ ਖਰਾ ਨਾ ਮਾਣਾ ਹੋਤ ਪ੍ਰਾਨੀ ਖਰਾ ਰੋੜ ਹੋਤ ਪ੍ਰਾਨੀ ਜਿਹੜਾ ਪ੍ਰਾਨੀ ਦਬਲ ਹੋ ਜਵੇ ਉਹ ਖਰਾ ਹੁੰਦਾ ਜੇ ਬੋਲਣਾ ਖਰਾਬ ਲੱਗ ਕੋ ਬਰਾਬਰ ਬਾਣ ਛੱਡ ਦੇ ਲੋ ਬਾਣ ਖੋਟ ਐ ਜੇ ਖੋਟ ਐ ਤਾਂ ਸਾਡੇ ਉਹ ਸ਼੍ਰੀ ਕੇ ਖੁਦਾ ਵੰਡ ਦਾ ਆਪਰ ਖੋਟ ਐ ਜੇ ਖੋਟ ਕੱਢ ਆਪੇ ਖਰਾ ਹੋ ਜਾਣਾ ਜੇ ਕੀ ਕੰਦੀ ਐ ਸਮਝ ਦੂਰ ਕਰ ਦੀਏ ਉਲਡ ਕੜਦੀ ਹੈ ਖਰਾਬ ਹੈ ਨਹੀਂ ਸੇ ਖਰਾਬ ਹੈ ਜੀ ਖਰਾਣਵਾਣਾ ਬੋਤਕ ਪ੍ਰਬੋਤਕ ਪ੍ਰਾਣੀ ਜਿਹੜਾ ਹੈਗਾ ਜੇ ਖਰਾ ਤੇ ਪ੍ਰਾਣੀ ਦੇ ਸੰਸਾਰ ਦੀ ਬੜਾਈ ਦੀ ਮਾੜਾ ਨਹੀਂ ਦੱਸ ਹੀ ਨਹੀਂ ਕਰਨੀ ਸੰਸਾਰਿਕ ਗੇ ਜੇ ਮੈਂ ਆ ਗੱਲ ਕਹਿਤੀ ਤਾਂ ਲੋਕਾਂ 'ਚ ਰਿਐਕਸ਼ਨ ਕੀ ਹੋਊਗਾ ਮੈਨੂੰ ਲੋਕ ਬੁਰਾ ਕਹਿਣਗੇ ਜਾਂ ਦੱਦਿਆ ਕਹਿਣ ਤੜ੍ਹਗੇ। ਜਾਂ ਮੇਰੇ ਕਿਸੇ ਨੇ ਬਗੜ ਨਹੀਂ ਲੱਗਣਾ ਇਸ ਗੱਲ ਦੀ ਪਰਵਾਹ ਨਹੀਂ। ਕਿ ਫੇਰ ਤਾਂ ਆ ਗਿਆ ਦੀ ਇਹ ਬਦਲਣ ਦੀ ਗੱਲ ਕਹੂੰ। ਦੇ ਬਦਲਣ ਦੀ ਗੱਲ ਕੋ ਜਿਹੜੀ ਉਹ ਪਸੰਦ ਕਰਦੇ ਅਸੀਂ ਕਰਦਾ ਰਹੇਗਾ ਵੀ ਸੰਦੱਤ ਹੈ ਬਦਲਣ ਦੀ ਗੱਲ ਦਾ ਪ੍ਰਚਾਰ ਕਰ। ਗੁਰੂ ਦੇ ਬਦਲਣ ਦੀ ਗੱਲ ਦਾ ਪ੍ਰਚਾਰ ਤਾਂ ਹੋ ਗਿਆ। ਸੰਤ ਤਾਂ ਫਿਰ ਗੁਰਦੁਆਰੇ ਕੀ ਕਰਨਉਂਦੀ ਹੈ ਇਹ ਪ੍ਰਚਾਰ ਹੈ ਆਪਣੇ ਬਦਲ ਆਉਂਦਾ ਹਸੂਦਾ ਗੁਰਦੁਆਰੇ ਕੀ ਕਰਦੀ ਜੇ ਅਸੀਂ ਗੁਰਦੁਆਰੇ ਜਾਣਾ ਤਾਂ ਗੁਰੂ ਕੀ ਬਦਲਣ ਜਾਂਦੇ ਅਸੀਂ ਗੁਰੂ ਕੀ ਮੱਤ ਦੇ ਅਪਣੀ ਵਾਦਾ ਰੰਗ ਛੱਡ ਜਾਂਦੇ ਇਹ ਵਾਦਾ ਪ੍ਰਚਾਰ ਕੀਤਾ ਜੇ ਜਿਹਦਾ ਉਹਨਾਂ ਕੀ ਲੈ ਤੇ ਇਹ ਜਿ ਸਿੱਖੀ ਬੰਨ ਲੈ ਫਿਰ ਸਿੱਖੀ ਬੰਨ ਲੈ ਚਲੋ ਸਾਨੂੰ ਤਾਂ 2 4 10 ਬੰਦੇ ਨੂੰ ਤਾਂ ਚੰਗੀ ਲੱਗਦੀ ਹੈ ਪਰ ਜਿਹੜੀ ਨਵੀਂ ਬਨੇਰੀਆ ਹਾਂ ਦਾ ਪੱਠਾ ਉਠਾਣ ਦਾ ਸੀ ਤੁਹਾਨੂੰ ਤਾਂ ਪਤਾ ਨਹੀਂ ਇਹ ਸੱਲ ਦਾ ਦਵੀਪਦੀਨੀ ਨੂੰ ਤਾਂ ਸੈਕਟੋ ਬਾਜੇ ਰੱਖ ਦਿੱਤਾ ਸੀ ਸਾਨੂੰ ਤਾਂ ਠੀਕ ਨਹੀਂ ਫਟਾਉਂਦੀ ਤੁਹਾਨੂੰ ਨਹੀਂ ਫਟਾਉਂਦੀ ਤੁਸੀਂ ਗੁਰਦਾਰੇ ਗਾਣਾ ਛੱਡ ਦਿਓ ਪਰ ਸੱਚ ਦਾ ਪ੍ਰਚਾਰ ਤੁਹਾਨੂੰ ਵਧ ਕਰੋ ਤੁਸੀਂ ਗੁਰਦਾਰੇ ਗਾਣਾ ਛੱਡ ਦੋ ਤਾਂ ਨਹੀਂ ਫਟਾਉਦੀਗਾ ਪਰ ਮੁੱਖ ਜਾਇ ਵੈਨ ਮੁਖਬਸ ਕਿਹਨੂੰ ਕਿਸੇ ਨੂੰ ਨਹੀਂ ਬੋਲਦੀ ਗੱਲ ਫੇਟਾਉਂਦੀ ਗੁਰਦੁਆਰੇ ਨਾ ਜਾਵੇ ਹੋ ਜਿਹਨੂੰ ਬਾਣੀ ਨਹੀਂ ਚੰਗੀ ਲੱਗਦੀ ਨਾ ਪੜ੍ਹੇ ਹੋ ਪਰ ਤੁਸੀਂ ਬਾਣੀ ਦੇ ਹੱਥ ਥੋੜੀ ਖਰਾਬ ਕਰਦੇ ਹੋ ਤੇ ਪਚਾਰ ਦੀ ਗਦਲ ਥੋੜੀ-ਥੋੜੀ ਗਦਲ ਕੋਲ ਵੀ ਤਾਂ ਬਰਾਦਾ ਗਦਲ ਪੜ੍ਹਨੀ ਸਿੱਖੀ ਨਹੀਂ ਹੈ ਤੁਸੀਂ ਅਜੀ ਚਾਰ ਆਦਮੀ ਲਾ ਜਾਈਏ ਗੁਰਦੁਆਰਾ ਚਲੂ ਹੈ ਉਹ ਐਸਾ ਗੁਰਦਾਰਾ ਮਰਮਤ ਫਲਾਵੇ ਬੰਦ ਹੋ ਜਾਣਾ ਚਾਹੀਦਾ ਗੁਰਦਾਰੇ ਦੇਖਿਆ ਤਾਂ ਬੰਦ ਹੋਇਣਾ ਨਹੀਂ ਦੇਖੀ ਭਾਈ ਜੇ ਮੰਨਣ ਵਾਲੀ ਆ ਰਹੀ ਹੈ ਉਹ ਗੁਰਦਾਰਾ ਤੁਸੀਂ ਬੰਦ ਮੁਖਤਾਰ ਰਹੇ ਹੋ ਕਹਿਣਾ ਗੁਰਦਾਰਾ ਚਦੂਆ ਸਾਡਾ ਉਹ ਤਾਂ ਬੰਦ ਹੋਇਣਾ ਚਾਹੀਦਾ ਬੋਲ ਨਾ ਫੈਲੇ ਹੋਰ ਸੁਗਾਰੇ ਨਾਲ ਸੀ ਬੜਾ ਚੰਗਾ ਕੰਮ ਕੀਤਾ ਜੀ 20 ਲੱਖ 50 ਲੱਖ ਰੁਪਇਆ ਲਾਤਾ ਸੀ ਗੁਰਦਾਰੇ ਬਣਾਏ ਸੋਚ ਦੇਖੋ ਕਹਿੰਦੇ ਇਹ ਸੋਚ ਆ ਹਉਮੈ ਦੀ ਗੁਰਵਣੀ ਸੋਚ ਨਹੀਂ ਆ ਸੋਚ ਗੁਰੂ ਤੋਂ ਪ੍ਰੰਦਾਸਾਰੀ ਹੋਉਂਦੀ ਹੈ ਕਿਉਂ ਉੱਥੇ ਬਗੜ ਬੜੀ ਦੀ ਗੱਲ ਹੈ ਸாரி ਚੌਧਰ ਦੀ ਗੱਲ ਹੈ دیਵਾਨਾ ਹੋਣਾ ਤਾਂ ਗੁਰਦਾਰੇ ਕੋਈ ਜ਼ਿਆਦਾ ਹੀ ਨਹੀਂ ਜਬਾਰੂ ਜਾਂਦਾ ਖਰਾ ਮਨਾਹ ਹੋ ਤਾ ਪਰਾਣੀ ਅੰਨ ਦਿਨ ਜਾਪਾ ਪ੍ਰਭ ਨਿਰਵਾਣੀ ਹਾਂ ਜੇ ਖਰਾ ਸੁਣਾ ਦਬੜਾ ਹੋ ਗਿਆ ਜਿਹੜਾ ਉਹਨੂੰ ਫਿਰ ਬੋਲਦਾ ਹੀ ਦੇਖੋ ਪ੍ਰਭ ਨਿਰਵਾਣੀ ਬੋਲਦਾ ਹੈ ਜੀ ਹੁਕਮਤ ਕਰਦਾ ਉਹ ਸਾਰਾ ਹੀ ਜਲਦਾ ਨਾ ਤਾਂ ਪਾਗਰ ਰੱਖੀ ਹੋਏ ਘੋੜੇ ਤੇ ਯਾਰੇ ਤਾਂ ਜਲੀਏ ਤੇ ਘੋੜਾ ਫੁੱਲੋ ਰਿਹੀ ਲੋ ਉਹ ਲਗੜਾਉਂਦੀ ਬੋਲੀ ਸਮਝਦਾ ਲਗਾਮ ਆ ਵਾਅਦਾ ਦੇ ਯਾਰੇ ਨੇ ਕੰਮ ਕਰਦਾ ਫਿਰ ਡੱਟਾ ਤੇ ਕੰਮ ਜਿਹੜਾ ਬੋਲਦਾ ਇੱਥੇ ਅਸੀਂ ਕਹਿੰਦੇ ਰਾਜਾ ਉਹ ਆ ਇਹ ਨਗਰ ਤਾਂ ਰਾਜਾ ਜੀ ਨਾ ਬੋਲਦਾ ਹੈ ਪਰ ਬੋਲਦਾ ਵੀ ਨਹੀਂ ਰਾਜ ਵੀ ਕਰਦਾ ਬੋਲਣ ਵਾਲੇ ਤਾਂ ਤਾਂ ਹਜ਼ਾਰ ਬਰੁੱਤ ਬੋਲਦਾ ਚੁੱਪ ਕੀਤੇ ਤੇ ਬਰਾਬਰ ਤਾਂ ਤਾਂ ਬੋਲਣ ਪਤਾ ਹੋਵੇ ਕਿ ਕਿਹੜਾ ਰਾਜ ਉਹ ਲਬਦਾ ਨਹੀਂ ਰਾਜ ਕਹਿੰਦੇ ਜਿਹੋ ਹੀ ਕਰਦਾ ਉਹੀ ਕਰਦਾ ਸਾਰੇ ਪੱਤੀ ਜਾਣਦੇ ਸੀ ਉਹਦੇ ਹੁਕਮ ਬਿਨਾ ਕੁਝ ਹੁੰਦਾ ਨਹੀਂ ਕਿੱਥੇ ਹੈ ਬਦਾਵਰੀ ਕਿਸਨ ਉਹ ਕਿੱਥੇ ਆ ਲਬਦਾ ਦੀ ਕਹਿੰਦਾ ਇਹਦੀ ਨਾ ਕਹਿੰਦਾ ਉਹਦੀ ਆਵਾਜ਼ ਨਹੀਂ ਸੁਣਦੀ ਰਾਹ ਸਾਰੇ ਉਹਨਾਂ ਨੂੰ ਕਰਦਾ ਪਰ ਜੇ ਨਵਾਣਾ ਹੋ ਜਵੇ ਤਾਂ ਅਨੰਦ ਜਾਪੇ ਪ੍ਰਭ ਦੇ ਗੋਰੀ ਫਿਰ ਉਹਦਾ ਉਹਦੇ ਨਾਲ ਹੱਥ ਬੁਰੜ ਬਣ ਰਿਖੇ ਲੁਈ ਸੰਪਰਕ ਹੋ ਜਾਂਦਾ ਅਰ ਹੋਇਆ ਰਹਿੰਦਾ ਉਹ ਹਉਮਦਾਰੇ ਬੱਚਾ ਹਉਮਦਾਰੇ ਜੁੜਿਆ ਰਹਿੰਦਾ ਹਉਮਦੂ ਪਰ ਜੇ ਨਵਾਣਾ ਉਹ ਕੱਢਣਾ ਹੋ ਗਿਆ ਹਕੂਮਤ ਦੇ ਵਿੱਚ ਜਾ ਲਉਂਦਾ ਰੋਣਾ ਹੋ ਗਿਆ ਹੀ ਉਹ ਕੋ ਮਿੱਠਾ ਲੱਗਦਾ ਵਾ ਰੋਣਾ ਹੁਕੂਮਤ ਵੀ ਮਿੱਠਾ ਲੱਗਦਾ ਇਹ ਤਾਂ ਇਹ ਲੱਗਦਾ ਵੀ ਇਹ ਹੁਣ ਚਾਹੀਦਾ ਸੀ ਆ ਹੋ ਗਿਆ ਬੜਾ ਮਾੜਾ ਹੋਇਆ ਆਪਾਂ ਕੋਈ ਹੋਰ ਕੋਈ ਧਿਆ ਹੋ ਜਾ ਕੁਝ ਹੋਰ ਇਹ ਕਿਉਂ ਦਾ ਰਹਿਣਾ ਬੰਦ ਤੂੰ ਕੋਈ ਧਿਆ ਹੋਣੀ ਕਹਿੰਦਾ ਜੋ ਹੋ ਰਿਹਾ ਠੀਕ ਹੈ ਮਤਲਬ ਇਹ ਨਵਾਣਾ ਤਾਰੇ ਜੋ ਹੋ ਰਿਹਾ ਠੀਕ ਹੈ ਜੋ ਕਰ ਰਿਹਾ ਠੀਕ ਹੈ ਬੰਦਾ ਮਨਾ ਤਾਂ ਜੀ ਆ ਬੜਕਾਈ ਨਹੀਂ ਹੈ ਕੋਈ ਠੀਕ ਹੈ ਜਿਹੜਾ ਹੋ ਰਿਹਾ ਭਾਵੇਂ ਖਸਮ ਤਾਂ ਉਹ ਆ ਸੁੱਕ ਦੇਤਾ ਆ ਸੁੱਕ ਦੇਤਾ ਦਾ ਮਤਲਬ ਹੁਗੋਬਿਆ ਹਾਕ ਵੀ ਕੋਈ ਗੱਲ ਹੈ ਹਾਕਮ ਦਾ ਜੇ ਹੁਕਮ ਚੰਦਾ ਲੱਗ ਜਾ ਕਹਾ ਹੁਕਮ ਚੰਦਾ ਲੱਗਿਆ ਕੋਈ ਗੱਲ ਨਹੀਂ ਜੇ ਜਨੇ ਆਪਣੀ ਗੱਲ ਨਹੀਂ ਬੰਦ ਤਾ ਗੁੱਸਾ ਦਾ ਜਿਹਦੀ ਗੱਲ ਆ ਉਸਨੂੰ ਉਸੇ ਟਕਰਨਾ ਜੇ ਕੋਨੇ ਨਹੀਂ ਆ ਜਾਂਦਾ ਤਾ ਉਹਦੇ ਤੇ ਹਾਕਮ ਨੇ ਮੁਸਾ ਕਰਦੇ ਹਾਕੋ ਨੂੰ ਯਾਦ ਪਾਉੜੋ ਜਿਆਦਾ ਉਹ ਜਿਹੜਾ ਹਕੂ ਨੂੰ ਬੰਦਾ ਸਰਗਾਚ ਪਰਵਾਹ ਲੈ ਖਸਬ ਹੋਦਾ ਹੈ ਪਰਵੇਸ਼ਨ ਹੋਦਾ ਹੈ ਜਿਹੜਾ ਨਹੀਂ ਹੋ ਸਾਰੀ ਕੋਨ ਭਾਵ ਹੈ ਭਾਵ ਹੈ ਉਹ ਸੁੱਖ ਸੁੱਖ ਦਿੰਦਾ ਉਹ ਖਸਮ ਸੁੱਖ ਦਿੰਦਾ ਤੇ ਭਰੇ ਅਰਕੇ ਬਸ ਸਾਰ ਦਾ ਰਾਜਾ ਹੋਵੇ ਸਿੱਖਾ ਦਾ ਕੋਈ ਬੱਦਾ ਹੋਵੇ ਪਾਵਰਫੁਲ ਜਬਰ ਮਹ Vishnu ਕੋਈ ਹੋਵੇ ਉਹ ਸੁਖੀ ਦੇ ਸਕਦਾ ਤੇ ਕੋਈ ਸੁਖੀ ਦੇ ਸਕਦਾ ਅਗਨਤਾ ਜਿਹੜਾ ਕਿਰਤੀ ਹੋਈ ਪਰ ਅਦੇ ਵਰਗਾ ਦੂਸਰਾ ਕੋਈ ਨਾ ਹੋਵੇ ਨਾ ਉਹ ਅਗਨਤਾ ਵੀ ਕਹਿੰਦੇ ਜਿਹਦੇ ਵਰਗਾ ਦੂਸਰਾ ਹੋਈ ਨਹੀਂ ਉਹ ਗਣਨਤਾ ਹੈ ਉਹ ਕਿਰਤੀ ਤੋਂ ਪਰੇ ਕਿਰਤੀ ਤਾਂ ਤਾਂ ਹੋਵੇ ਜੇ ਕੋਈ ਦੂਜਾ ਹੋ ਜਾਊਗਾ ਹੋਮ ਨਤੀਜਾ ਵੀ ਹੋਵੇ ਚੌਥਾ ਵੀ ਹੋਵੇ ਦੂਜਾ ਹੀ ਨਹੀਂ ਕੋਈ ਉਹਦੇ ਵਰਗਾ ਇਸ ਕਰਕੇ ਗਣਨਤਾ ਹੈ ਕਿਰਤੀ ਤੋਂ ਹੀ ਪਰੇ ਬਾਏ ਜਿਹੜਾ ਇੱਕ ਹੰਦਰ ਇੱਕ ਕਲਪ ਦੀ ਕਿਰਤੀ ਸੀਗੀ ਹੁੰਦੀ ਕਿਰਤੀ ਇੱਕਦੋਨ ਦੀ ਸ਼ੁਰੂਆਤੀ ਕਿਰਤੀ ਦੋ ਦੇ ਸਿਰ ਗਿਰਤੀ ਇੱਕ ਤੋਂ ਰਿਸ਼ ਨੂੰ ਗਿਰਤੀ ਦੋ ਤੋਂ ਰਿਸ਼ ਨੂੰ ਬਾਇਰ ਹੀ ਨਹੀਂ ਤੇ ਲੋਡ ਕਿੱਥੇ ਗਿਰਤੀ ਹੈ ਜੀ ਬਾਇਰ ਅਵਧੀ ਕਰੀਏ ਬਿਲਡ ਕਰਦੇ ਨੇ ਤਸੀਲਾ ਕਰਦੀ ਆ ਰਹੇ ਤੇ ਬੀਲ ਕਰਦੇ ਹੈ ਗਿਰਤੀ ਹੈ ਦੇ ਵਿੱਚ ਗਿਰਤੀ ਕਿਉਂ ਨਹੀਂ ਹੈ ਇੱਕੋ ਹੀ ਗਿਰਤੀ ਨਹੀਂ ਇਤਨਾ ਫਿਰ ਤੇਰੀ ਹੱਥ ਹੋ ਸਕਦੀ ਓਥੇ ਕਹਾਇਓਏ ਇਹ ਜੇ ਦੂਈ ਤੇ ਸੁਦਾ ਕੋਈ ਚੀਜ਼ ਹੋਵੇ ਤਾਂ ਕ੍ਰਿਤੀ ਸ਼ੁਰੂ ਕਿਸੇ ਵੀ ਕੋਈ ਲੱਭਾ ਕਰਨੇ ਬੈਠੇ ਵੀ ਅਸੀਂ ਸਰੋਂ ਵੀ ਕੀ ਕਹਿੰਦਾ ਕਿ ਦਾਣੇ ਵੀ ਤੇ ਸਰੋਂ ਆਹ ਕਹਿੰਦਾ ਸਰੋਂ ਵੀ ਨੇ ਉਹ ਭਜਨ ਕਹਿੰਦਾ ਦਾਣਾ ਇਕ ਰੀ ਵੀ ਕੋਈ ਹੈ ਘਰ ਦੇ ਘਰ ਕੋਈ ਕਣਕ ਵੀ ਜੀ ਇੱਕ ਵਜਨ ਜੈਦਾਨ ਹੋ ਰਹੀ ਹੋ ਵੀ ਜੀ ਕਣਕ ਆ ਕਣਕ ਦੀ ਗੱਲ ਕਣਕ ਲੈ ਕੇ ਆ ਕਣਕ ਲੈ ਕੇ ਵੀ ਗੰਦ ਵੱਢਦੀ ਆ ਗਿਣਤੀ ਨਹੀਂ ਗਿਣਤੀ ਦੋ ਤੋਂ ਸ਼ੁਰੂ 100 ਹੀ ਹੈ ਜੇ ਦੁਆਰੀਆ ਗਣਤੀ ਹੈ ਤੇ ਦੁਆ ਘਰਤੀ ਹੈ ਹਾਲਾਂਕਿ ਮਾਇਆ ਵੀ ਧੋਏ ਨੇ ਟੀਆ ਨਹੀਂ ਹੈ ਬਸ ਇੱਕ ਕਾਵਦੂਜੀ ਬਹਾ ਦੁਤੀਆ ਬਹਾ ਉਹ ਬਟਾਇ ਤ੍ਰੇਤੀਆ ਬਹਾ ਉਹ ਵਿਗਤ ਆਇਆ ਹੈ ਬਾੜੀ ਚ ਆਇਆ ਦੁਇਆ 2 ਨੰਬਰ ਤੇ ਮ ਆਇਆ ਇਸ ਕਰਕੇ ਦੇ ਵਿੱਚ ਉਹ ਮਾਇਆ 2 ਉੱਪਰ ਤੇ ਆਈ ਜੇ ਇੱਥੇ ਗਿਰਦੀ ਹੈ ਇੱਥੇ ਗਿਰਦੀ ਗਿਰਦੀ ਦੋ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਯੂਨੀਵਰਸਿਟੀ ਕਹਿੰਦਾ ਸਵਾਲ ਹੈ ਪੜਾਈ ਵਾਲਾ ਦਾ ਸਵਾਲ ਹੈ ਕੋਲ ਨੰਬਰ ਕੱਟ ਨੰਬਰ ਕੱਟਣਾ ਕੱਟ ਲੈ ਉਹਨਾਂ ਦੇ ਸਾਰੇ 6 ਇਤਰਾ ਹੀ ਤਾਂ न <laughs> बीओ <laughs> <था? laughs> है एक टिक्को जी चीज है ओद के एक चो बस जते वैरायटी है ओथे दुई जाओ जेड़ा अगणत है वैरायटी नहीं है ओ ਮਾਇਆ ਜਿੱਥੇ ਵੀ ਕੋਈ ਆ ਗਈ ਪੁਲਿਸ ਆ ਗਈ ਹਾਂ ਪੁਲਿਸ ਆ ਗਈ ਕੋਈ ਕੋਈ ਨਹੀਂ ਸਾਰੇ ਫਿਜੜ ਆ ਗਿਆ ਆਹ ਪੇਡਾ ਨੇ ਫਿਜੜ ਕਹਿੰਦੇ ਜਿਹੜੇ ਲੈਦੇ ਆ ਉਹਨੇ ਕੱਠਵਾਜ ਦੂ ਆ ਗਈ ਇੱਥੇ ਵੀ ਬਿਨੇ ਜੀ ਵੀ ਇੱਥੇ ਹੀ ਜਿੱਤੇ ਵੈਰਾਈਟੀ ਹੈ ਉੱਥੇ ਅਡਰਦੁੱਤੀ ਹਾਲਾਂਕਿ ਆਜ ਦੀ ਸਦਲ ਕੁਦਰਤ ਮਿਲਦੀ ਦੀ ਹੈ ਇਟੇਕ ਕੁਦਰਤ ਮਿਲਦੀ ਜੀ ਹੈ ਸਵਾਇਕ ਕੁਦਰਤ ਬਣਦਾ ਨਹੀਂ ਕਿ ਤਾਂ ਵੀ ਇਕੱਠਵਾਜ ਕੇ ਰੋਲ ਲੱਗਦੇ ਬਾਦਮੀ ਖੜੇ ਆਂਮੀ ਕਰ ਕੇ ਰੋਲ ਫੌਜ ਹੈ ਸੰਗਤ ਹੈ ਇੱਕ ਵਜਨ ਜਰਰ ਨੇ ਉਹ ਤਾਂ ਨਰਮ ਇੱਕ ਵਜਨ ਇੱਕ ਵਜਨ ਚ ਕਾ ਵੀ ਲੈ। ਅਜ। ਆਰਮ ਐਸੋ ਅਗੰਤਾ। ਐਸਾ ਆਰਮ ਗਿਰਤੀ ਤੋਂ ਬਣੀ। ਉਹਦੀ ਗਿਰਤੀ ਦੋ ਤੋਂ ਸ਼ੁਰੂ ਹੁੰਦੀ ਹੈ। ਦੂਆ ਤਾਂ ਗਿਰਤੀ ਇੱਕ ਦੀ ਅੱਧੀ ਗਿਰਤੀ। ਪਰਮਾਤਮਾ ਨਹੀਂ ਹੋਗਾ ਹੈਗਾ ਤਾਂ ਉਹ ਮੈਂ ਆ ਗਿਆ ਬਹੁਤ ਪਰਮਾਤਮਾ ਆਤਮ ਦਾ ਸਰਬਸ਼੍ਰੇਸ਼ਟ ਰੂਪ ਪਰਮਾਤਮਾ ਹੈ ਪਰਮ ਹੈ ਬ੍ਰਹਮ ਦਾ ਵੀ ਸਰਬਸ਼ੇਸ਼ ਰੂਪ ਹੈ ਉਹ ਪਰਮ ਤੋਂ ਪਾਰ ਹੈ ਸਰਬਸ਼ੇਸ਼ ਰੂਪ ਹੈ ਇਹ ਬ੍ਰह्म ਤੋਂ ਪਰੇ ਹੈ ਬਸ ਬ੍ਰह्म ਤੋਂ ਰਬ ਪ੍ਰਾਤਮਿਕ ਉਹ ਤੇ ਆਤਮਾ ਦਾ ਸਰਵਸ਼ੇਸ਼ ਰੂਪ ਸ੍ਰੂਪ ਪਰ ਆਤਮਾ ਪ੍ਰਭੂ ਦਾ ਹੀ ਸਰਵਸ਼ੇਸ਼ ਰੂਪ ਹੈ ਆਤਮਾ ਦਾ ਪ੍ਰਾਤਮਿਕ ਦਾ ਸਰਵਸ਼ੇਸ਼ ਰੂਪ ਨਹੀਂ ਹੈ ਆਤਮਾ ਦਾ ਪਰ ਦਾ ਸਰਵਸ਼ੇਸ਼ ਰੂਪ ਉਤਾਰੀ ਜੋ ਤਰੀਆਂ ਦਮ ਤੱਕ ਪਰ ਉਹਦਾ ਘਰ ਉੱਪਰ ਹੋਰ ਹੈ ਪਰ ਜਿਹੜਾ ਪ੍ਰਾਤਮਿਕ ਨੂੰ ਖੋਲ ਗਿਆ ਹੈ ਆਤਮਾ ਚੇਲੇ ਔਰ ਚੇਲੇ ਦੀ ਸਤਿ ਬਲਾਈ ਮਤਲਬ ਆਤਮਾ ਪ੍ਰਾਤਮਿਕ ਇਕੋ ਹੈ ਅਗਰ ਅਸੀਂ ਇਹ ਸੋਚਨੇ ਕਿ ਵੀ ਬਾਹਰ ਹੀ ਡਿਵੈਲਪ ਹੋ ਕੇ ਖੁਰਮਾ ਇਹਦੀ ਇਹਦੀ ਬਾੜੇ ਵਿਵਲਪ ਹੋ ਕੇ ਗੁਰੂ ਦੇ ਕੋਠਾ ਕੋਠੇ ਚੜ੍ਹਦੀ ਲੱਗਦਾ। ਗੁਰੂ ਕੋਗੇ ਚਾਰ ਚਾਰ ਬੜਾ। ਐਂਦੀ ਸਮਝ ਆ ਗਈ। ਵੀ ਜਿਹੜਾ ਹੈ ਨਾ ਆਪਣਾ ਜਿਹੜਾ ਬਾਲ ਸੀ ਚੜ੍ਹਦੀ ਨਹੀਂ ਸੀ ਬਸ ਇਹ ਨਹੀਂ। ਕੋਈ ਨਵੜ ਖਰਾ ਹੀ ਪ੍ਰਾਣੀ ਜਿਹੜਾ ਹੈਗਾ ਉਹਦਾ ਸਿਰਫ ਕੰਮ ਹੈਗਾ ਨਿਵਾਣਾ ਵਿਵਾਣਾ ਹੋਇਆ ਹੈ ਜਿਹੜਾ ਪ੍ਰਾਣੀ ਹੈ ਉਹ ਵੀ ਪਰਮਾਤਮਾ ਸਰਬਸ਼ੇਸ਼ਟ ਆ ਬਹੁਤ ਸ਼ਰਤੀ ਖੋੜ ਕੀ ਸੀ ਖੋੜ ਹੋ ਗਏ ਸੀ ਜੇ ਖੋੜ ਤੇ ਅਧੜੀਏ ਦੇ ਉਹ ਪਰਮੇਸ਼ਰ ਜਿਹੜਾ ਲੱਗਿਆ ਬਾਰ ਬਰਬਦਰ ਲੱਗਿਆ ਪਰਮੇਸ਼ਰ ਦੇ ਭੁਲੇਵੇਂ ਆਪਕੋ ਤਾਂ ਫਿਰ ਹੋ ਜਾਂਦੇ ਆ ਈਸਰ ਲਖਜ਼ਾ ਪਰਮੇਸ਼ਰ ਨਹੀਂ ਨਹੀਂ ਮੈਂ ਤਾਂ ਈਸਰ ਕੁਰ ਲੱਕੇ ਅਧਰੂ ਕੁਰੂਰ ਲੱਕੇ ਇਹ ਸਾਰਾ ਵਿਅਕਤੀਵਾਦ ਹੈ ਈਸ਼ਰ ਘਟਣਾ ਸੀ ਸਿਰਫ ਕਿ ਤੋਂ ਉੱਪਰ ਕਹਿਣਾ ਬਕਰਵਾ ਈਸ਼ਰ ਪਰਮੇਸ਼ਰ ਕਾਹੇ ਈਸ਼ਰ ਘਟਾਇਆ ਈਸ਼ਰ ਕਾਹੇ ਈਸ਼ਰ ਉੱਥੇ ਨਾ ਦੇਵਤੀ ਈਸ਼ਵਰ ਨਾਲ ਪਰਮੇਸ਼ਰ ਦਾ ਨਾਮ ਹੁੰਦੇ ਕੱਲਾ ਪਰਮੇਸ਼ਰ ਵੀ ਪਰਮੇਸ਼ਰ ਨੂੰ ਤੇ ਲੱਗਦੀ ਕੋਈ ਈਸ਼ਰ ਕੱਟ ਕੇ ਪਰਮੇਸ਼ਰ ਕਰਤਾ ਕਿ ਉਹ ਤੋਂ ਈਸ਼ਰ ਤੋਂ ਕਹਾ ਹੈ ਪਹਾੜੇ ਦਾ ਪਰਮੇਸ਼ਰ ਇਹਦੇ ਕਿਤੇ ਨਹੀਂ ਲੱਗ ਉਹ ਦੂਰ ਕੜੇ ਆ ਰੋਕ ਇਹ ਰਿ ਬੇਤੀ ਵਾਸਤੇ ਬੰਦਿਆ ਨੇ ਲਾਉ। ਈਸ਼ਰ ਉਹਦੇ ਵਾਸਤੇ ਪੰਜਾਬੀ ਆਪਣੀ ਇਸਤ ਲਾਉ। ਆਪਣਾ ਜਿਉਂਕੜਾ ਦਾਦਾ ਪਾਹਰੇ ਜਗਾਂ। ਈਸ਼ਰ। ਗਲਤੀ ਜਿਹੜੀ ਗਲਤੀ ਹੈ ਬੇਅੰਤ ਗਲਤੀ ਹੈ ਅਣਗਿਣਤ ਗਲਤੀ ਹੈ ਤੂੰ ਇੱਕ ਅੱਖਰ ਵਿੱਚ ਬਖਸ਼ ਦਿੰਦਾ ਹੈ ਬਖਸ਼ਣਹਾਰ ਸਾਹਿਬ ਸਦਾ ਜਿਆਰਾ ਉਹ ਸਾਹਿਬ ਸਦਾ ਜਿਆਰਾ ਜੇ ਕੋਈ ਜਾਵੇ ਉਹਦੀ ਛੜ ਜੇ ਕੋਈ ਆਪਣੀ ਹੋਵੇ ਤਿਆਗ ਦੇਵੇ ਜੇ ਕੋਈ ਆਪਣੀ ਖੋਟ ਕੱਢ ਦੇਵੇ ਹਾਂ ਇਹ ਗੱਲ ਆ ਬਈ ਫਿਰ ਬਈ ਤੂੰ ਦਾ ਪਹਿਲਾ ਹੈ ਕੋਈ ਬਤਰੀ ਨਹੀਂ ਪਉਦਾ ਜੇ ਕੋਈ ਵਾਫੀ ਆਵੇ ਤੇ ਦਕਾਸ ਲੈ ਕੇ ਜਾਵੇ ਰ ਭੀ ਕਤੀਲ ਬਖਸ਼ੌਦ ਵੀ ਜਦ ਇਹ ਸਮਝ ਕਰ ਦਿੰਦਾ ਵੀ ਠੀਕ ਹੈ ਤਰੀ ਗਰੀ ਬੋਲਦਾ ਕੋਈ ਕਲੈਰੀਫਿਕੇਸ਼ਨ ਦੀ ਬੋਲਦਾ ਸਾਈਨ ਕਰਲੀ ਕਰਦਾ ਕੋਸ਼ਿਸ਼ ਦੇਖੇ ਨੀ ਬੱਚਣ ਹਰੋ ਇਹ ਆਮ ਜਾਣ ਨੂੰ ਲੱਗਣਾ ਕਰਨ ਵਾਲਾ ਤਿਆਰ ਬੈਠਾ ਉਹ ਦੇਖੀ ਕੋਈ ਟੱਲਾ ਹੈ ਕਿ ਸਿਰ ਬਰਖਸ਼ਣਾ ਦਾ ਮਸਲਾ ਗਿਆ ਉਹ ਨਾ ਆਪਣੇ ਤੇ ਮਾਰ ਮਿਲਦਾ ਜੇ ਵੀਰ ਨੂੰ ਮੈਨੂੰ ਐਸੀ ਠੀਕ ਧੋਗੀ ਮਾਰ ਲੈਣੀ ਉਹਨੇ ਤਾਂ ਵਾਹ ਸਾਹਿਬ ਸਦਾ ਦੇਣਾ ਸਦਾ ਹੀ ਦੇ ਆ ਲੈ ਇਹ ਕਦੇ ਵੀ ਐ ਨਹੀਂ ਹੁੰਦਾ ਵੀ ਸਾਫ ਦਾ ਬੋਰਡ ਅੱਜ ਠੀਕ ਨਹੀਂ ਹੈਗਾ ਜਬਸ ਕੇ ਜਾਣ ਦੀ ਲੋੜ ਈ ਹੈ ਸਦਾ ਦੇ ਰਹੇ ਕਹਿੰਦਾ ਬੋਰਡ ਦੇਖ ਕੇ ਜਾਣ ਦੀ ਲੋੜ ਇਸ ਵਾਰ ਆਦਮ ਕਿਹੜਾ ਬੋਲ ਜੁੱਤੇ ਕਿਹੜਾ ਉਹਦਾ ਬੋਲ ਵੀ ਤੇਰਾ ਕੋਈ ਜਿਹੜਾ ਦੱਸਦਾ ਨਹੀਂ ਮਾੜੂ ਬਈ ਅੱਛਾ ਅੱਛਾ ਮੁੰਨੂੰ ਆਇਆ ਸਤਿ ਕਹ ਹੋਂ ਮਨ ਮੇਰੇ ਸਤਿ ਕਹ ਸੁਣ ਮਨ ਮੇਰੇ ਸਨ ਪਰੋ ਹਰ ਰਾਇ ਛੜ ਪਰੋ ਹਰ ਹਰ ਰਾਇ ਦੀ ਛੜ ਪੈ ਜਾ ਇਹ ਮੇਰੇ ਮਨ ਪੈ ਜਾ ਜਿਹੜੀ ਤੇਰੀ ਹੈ ਨਾ ਤੁਹਾਨੂੰ ਆਤਮਾ ਦੀ ਅੰਤਰਾਤਮਾ ਦਾ ਪਤਾ ਨਹੀਂ ਲੱਗਦਾ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਜੋ ਉਹ ਕਹਿੰਦੀ ਹੈ ਉਹ ਕਰਿਆ ਤਾਂ ਉਹ ਹੀ ਸਾਨੂੰ ਕਹਿੰਦੀ ਅੰਤਰਾਤਮਾ ਦਾ ਰੋਦਰ ਮਤਲਬ ਕੀਤਾ ਲੋੜੀ ਹੈ ਕਬ ਸੁਭਾ ਕਰਾ ਸੁਹਰ ਪਿਆ ਹਰਿਆ ਹੋਈ ਇਹਦਾ ਵੀ ਮਤਲਬ ਹੈ ਅਸੀ ਕੀ ਕਰਨ ਲੱਗੇ ਫੋਲਡ ਕਰਨ ਲੱਗੇ ਜੋ ਤੇ ਜਿਹੜਾ ਕੰਮ ਕਰਦੇ ਮੁੱਖ ਵਖ ਲੈ ਕੋਆ ਖਬਰੇ ਕਿਡ ਆਈ ਵੇ ਮੁੱਖ ਵਖ ਦੰਦਰੋ ਤਾਂ ਲਿਆੜੀ ਤੇ ਜਿਹੜਾ ਤੁਸੀਂ ਦੇਖਦਾ ਜਿਉਂ ਸੋਚ ਰਹੇ ਨੂੰ ਉਹਦੀ ਗੱਲ ਕਰੋ ਕੀ ਸੋਚਦੇ ਉਹ ਦੱਸੂਗਾ ਉਹ ਦੱਸੂਗਾ ਬੋਖਵਾ ਗਲੇ ਉਹ ਕੋ ਖਵਾ ਦਾ ਕਿ ਜਬੰਦਾ ਵੀ ਕਹਿ ਕਹਦਾ ਨਹੀਂ ਹੈ ਜੱਗਾ ਦਾ ਦੂਆ ਲਓ ਰਿਆ ਰੋ ਰਿਆ ਕਹਿੰਦੇ ਬੋਖਵਾ ਗਰੀ ਚੰਗਾ ਆ ਉਹ ਪੱਤਰੀ ਵਾਲਾ ਗੱਲ ਕਰਨੀ ਨਹੀਂ ਪੰਡਤ ਪੱਤਰੀ ਕਰ ਪੱਤਰੀ ਵਾਲੀ ਗੱਲ ਬਣਾਦੀ ਪੱਤਰੀ ਤੋਂ ਕਰਦੇ تھے ਕੋਈ ਬਹੂਰ ਕੰਢ ਕੰਮ ਕਰਨ ਤੋਂ ਪਹਿਲਾਂ ਪੱਤਰੀ ਬਣਾ ਕੇ ਰੱਖ ਲੈਣ ਪਾਤਰੀਏ ਉਪਦੇਸ਼ ਹੈ ਬੰਦੀ ਇਹਦਾ ਉਹਦਾ ਕੋਈ ਸੁਭਦਰੀ ਹੈ ਉਹ ਅੰਦਰ ਬੈਠੇ ਸਾਡੇ ਉਹਦੇ ਬੱਚੋ ਹਰ ਪੈ ਆਖੀਏ ਕਿਹਾ ਸੀ ਮੇਰੇ ਹਰਤਾ ਨਹੀਂ ਹੈ ਇਹ ਆਖੀਏ ਜੀ ਜੇ ਬਾਹਰ ਤੋਂ ਪੁੱਛੀਏ ਹਰ ਨੂੰ ਪੁੱਛੀ ਹਰ ਪੈ ਆਖੀਏ ਹਰ ਨੂੰ ਦੱਸਿਓ ਵੀ ਕੀ ਕਰੀਏ ਤੀਰ ਆ ਇਹ ਕਿਉਂ ਕੀ ਜਵਾਬ ਆਉਂਦਾ ਉਹ ਦੀ ਉਡੀਕ ਕਰੀਏ ਭਾਈ ਇਹ ਜੇ ਆਪਾਂ ਜਿਹੜਾ ਨੇ ਪਾਣੀ ਪ੍ਰਚਾਰਨ ਕੀਤੀ ਜਾਂ ਵੇੜ ਤਿਆਰ ਕੀਤੀ ਤੁਹਾਨੂੰ ਤੇ ਛਟਗੇ ਤੁਹਾਨੂੰ ਸ਼ਾੜੇ ਬੰਦੀ ਬੱਟੇ ਬੰਦੀ ਤਾਂ ਉਹਨਾਂ ਨੂੰ ਪਤੀ ਸਭ ਦੋ ਅਸੀਂ ਬਾਅਦ ਕੀ ਲਿਖ ਲਿਆ ਸਾਨੂੰ ਕੋਈ ਜਦੋਂ ਫਿੱਟ ਲਿਆ ਇਹਦਾ ਮਤਲਬ ਕਹਿ ਹੋਣਾ ਸਾਨੂੰ ਨਹੀਂ ਫਿੱਟ ਆਇਆ ਅਸੀਂ ਬਦਲ ਲਿਆ ਨੇ ਕਈ ਲਫ਼ਜ਼ ਬਦਲ ਲਏ ਦੇ ਵਿੱਚ ਉਹ ਕਹਿੰਦੇ ਇਹ ਹੰਤਾ ਹੈ ਆ ਲਫ਼ਜ਼ਾਂ ਦੇ ਫਿਰ ਆਪਣੀ ਮਤ ਕਹਿੰਦੀ ਨਾ ਉੱਥੇ ਜੇਲ ਤਾਂ ਆਪਣੀ ਮਤ ਪਈ ਹਰ ਪੈ ਅਸੀਂ ਉੱਥੇ ਬਤਲ ਜਿਹੜੀ ਇਹ ਪਰਪਰਾ ਚੱਲਨੀ ਬੁਖਵਾਕ ਲੈ ਲੋ ਉਹਨਾਂ ਨੂੰ ਹਰ ਵਾਰ ਹੈ ਗੱਲ ਰਹੀ ਸੀ ਅੰਤਰਾਤਮਾ ਨੂੰ ਟੁੱਟ ਗਿਆ ਊਤਰਾਤਮਾ ਹਰੀ ਪਤਾ ਹੈ ਜਦੋਂ ਕਹਿੰਦਾ ਗੁਰੂ ਮੇਰਾ ਸੰਤ ਸਦਾ ਹੈ ਨਾਲੇ ਜਿੱਥੇ ਆ ਨਾ ਹੋਵੇ ਥੋੜੇ ਕੋਲ ਉੱਥੇ ਕੀ ਕਰੋ ਜੇ ਆ ਨਾ ਹੋਵੇ ਤੁਹਾਡੇ ਕੋਲ ਉੱਥੇ ਕੀ ਕਰੋਗੇ ਕਲੋੜੀਏ ਕੰਮ ਕੰਮਦਤ ਕਿਤੇ ਪੈਸਾ ਤਾਂ ਤੁਸੀਂ ਵੀਰ ਨਾਲੇ ਰੱਖੋ ਦੇਖਾ ਹਰ ਵਾਰ ਖਰੀਦਦਾਰ ਜੀ ਰੱਖੋ ਨਾਲ ਬਾੜੀ ਪੀੜੇ ਵਿਭਾਗ ਦੇ ਅਧਿਪਤ ਤੇ ਦੇ ਤੋਖ ਲੈ ਲੋ ਕਿਤਾ ਲੋੜੀਏ ਕੰਮ ਥੋੜੀ ਕਿਹੜਾ ਕੰਮ ਕੰਮ ਤੇ ਗਾਂ ਦੀ ਦਿੱਕ ਪੱਟਾ ਉਹਨਾ ਪੱਟਾ ਵੀ ਕੰਮ ਤੇ ਬੂਫ ਕਾਦ ਲੈ ਲੋ ਤੁਸੀਂ ਕਿ ਖਾਣਾ ਦਾ ਨਾਮ ਖਾਣਾ ਮੁਖਵਖ ਲੈ ਲਓ ਖਾਣਾ ਸਭ ਜੇ ਨਹੀਂ ਬਣਦਾ ਕੋਈ ਮੁਖਵਖ ਦਾ ਗੱਲ ਹੈ ਕੋਈ ਇਹ ਕੀ ਮਤਲਬ ਸੀ ਇਹਦਾ ਮੁੱਖ ਆਖ ਲੈਣਾ ਉਪਦੇਸ਼ ਹੈ ਉਹ ਤਾਂ ਇੱਕ ਸਭ ਜੇ ਦੇ ਵਿੱਚੋਂ ਤੁਸੀਂ ਪਾਸ ਹੋ ਕੇ ਕਿਵੇਂ ਜਾਂਦੇ ਕੰਮ ਤਾਂ ਉਹ ਇਹਦੇ ਕੰਮ ਆਏ ਹੋਇਓ ਉਹਦੇ ਬਾਕੀ ਆਰਡ ਕਰਦਾ ਤੁਹਾਨੂੰ ਉਹ ਸਭ ਸਾਰੇ ਕੰਮ ਨਹੀਂ ਕੀਤਾ ਉਹ ਕੰਮ ਆਪਣਾ ਕੁਝ ਪਾਗ ਤੋਂ ਬਜਟ ਦੀ ਤੇ ਆਪਣੀ ਮਰਜ਼ੀ ਨਾਲ ਨਾ ਕੁਝ ਕਰੋ ਅੰਤਰਾ ਦੋਰੀ ਵਾਇਰਲ ਚੱਲੋ ਬਈ ਇਹ ਕਰਨਾ ਚਾਹੀਦਾ ਕਰਨਾ ਚਾਹੀਦਾ ਵਿਚਾਰ ਕਰਨ ਦੀ ਗੱਲ ਹਰ ਪੈ ਆਖੀਏ ਤਾਂ ਵਿਚਾਰੇ ਤਾਂ ਨਿਸ਼ਾਰਿਆ ਵੀ ਆ ਕਰੀਏ ਆ ਕੰਮ ਕਿਵੇਂ ਕਰੀਏ ਪੇਰਾਂ ਦਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਅਸਰ ਵਿੱਚ ਗਾਲੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਪੇਰਾਂ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ ਕਾਉਂ ਪਿਗਾੜੇ ਆਪੜੋ ਜਦ ਤੋ ਹੋਦਰ ਜਗ ਦਾ ਹਜ਼ੂਰ ਹੈ ਕਿ ਜਦੋਂ ਕੰਮ بگੜੂਆ ਸੰਸਾਰ ਦਾ ਤਾਂ ਹੱਸਾ ਹੀ ਹੁੰਦਾ ਹੋਰ ਕੀ ਹੁੰਦਾ ਜਦੋਂ ਜਗ ਜਾਰਸਾ ਹੁੰਦਾ ਜੱਕ ਮੈਂ ਹੋ ਤਾ ਸਾਰੇ ਚਿੱਤ ਮੈਂ ਚੈਨ ਨਾ ਪਾਵਾ ਫਿਰ ਪਰੇਸ਼ਾਨ ਹੁੰਦਾ ਪਹਿਲਾਂ ਬਿਰੋ ਵਿਚਾਰੇ ਕਰਦਾ ਫਿਰ ਪਰੇਸ਼ਾਨ ਹੁੰਦਾ ਤੇ ਦੁੱਖ ਵੜਾ ਹੁੰਦਾ ਖਾਣ ਪਾਣ ਸਦਬਾ ਰਾਗ ਰੰਗ ਬਨੂਰ ਭਾਵ ਐਸੀ ਗਲਤੀ ਕਰ ਲੈਂਦਾ ਫਿਰ ਉਹ ਵਿਚਾਰੇ ਤੇ ਸਭੇ ਉਹ ਜਨਨ ਸਭ ਕੁਛ ਛੱਡ ਜਾਂਦਾ ਖਾਣ ਪਾਲਣ ਦੀ ਜਗਾ ਲੱਗਦਾ ਸਰਬਾਨ ਵੀ ਨਹੀਂ ਜਗਾ ਲੱਗਦਾ ਰਾਗ ਰੰਗਵਰੀ ਜਿੰਦਾ ਮਾਰੀ ਵੀ ਆ ਕੱਲ ਕਿੱਥੇ ਮਾਰੀ ਚੱਕ ਰਾਗ ਰੰਗ ਮਨੂਰੋ ਭਾਵਾ ਕਹੀ ਗੁਰਦਰ ਕਬੀਰ ਆਏ ਗੁਰਦਰ ਇਹ ਗਿਰਦਰ ਕਵੀ ਰਾਏ ਦਾ ਮੜ ਕੇ ਮਤਲਬ ਹੈ ਸਤੋਗਣੀ ਕਵੀ ਹੋਏ ਸਤੋਗਣੀ ਕਲ ਸਤੋਗਣੀ ਤੋਂ ਰਾ ਹੋਈ ਹੈ ਉਹ ਸਤੋਗਣੀ ਤੋਂ ਖੁਰਿਆ ਪਾ ਇਹ ਖੁਰਿਆ ਪਾ ਦਾ ਇਹ ਖੁਰਿਆ ਪਾਤੀ ਸਤੋਤ ਕੋ ਸਤੋ ਗੁਣੀ ਪਰ ਥੱਲੇ ਆਉਗੀ ਕੋਈ ਇੱਕ ਤੁਜੀ ਕੀ ਕਲਾ ਸਟੈਪ ਹੀ ਗਿਆ ਇੱਕ ਸਟੈਪ ਕਰ ਲੈ ਤੂੰ ਇਸ ਸਤੋ ਗੁਣੀ ਕਵੀ ਸੁਖਸਾਈ ਸਾਚੂ ਭਾਇਦਰੇ ਵੀ ਹੈਗੇ ਨਜ਼ਰ ਜੋ ਨੀ ਸ਼ਿਆਣੇ ਆਦਮੀ ਗੱਲ ਕਰਕੇ ਤਰਕਵੀਰ ਆਨੇ ਉਹ ਗੱਲ ਕਹੀ ਹੈ ਜਿਹੜੀ ਸਿਆਣੇ ਕਹਦੇ ਹੁੰਦੇ ਸਾਰੇ ਸਾਰੇ ਇਹੀ ਗੱਲ ਕਹਿੰਦੇ ਨੇ ਤੇ ਹਾਂ ਨਾ ਕਹੇ ਕਰਦਰ ਕਵੀ ਰਾਏ ਸੁਡੋ ਜਨ ਹਰ ਕੇ ਪਿਆਰੇ ਉਹ ਹੋਰ ਹੈ ਇਹਦੀ ਕਾਹਤ ਕਾਹ ਨੂੰ ਹਰਲਾ ਤੇ ਨਾ ਚੱਲ ਵੀ ਆ ਗਿਆ ਹਰਿਓ ਚੱਲ ਵੀ ਆ ਗਿਆ ਹਰਿ ਕਾਇ ਕਰ ਤਰ ਕਬੀਰ ਹੈ ਸੋੜੋ ਜਨ ਹਰ ਕੇ ਪਿਆਰੇ ਖੜਕਦਾ ਹੈ ਜੀਵਾਰੀ ਕੀ ਹੈ ਜੋ ਬਿਰੋਚਾ ਬਿਨਾ ਵਿਚਾਰੇ ਜ਼ਿੰਦਗੀ ਜਿਉ ਰਹੋਗੇ ਖੜਕਦੀ ਰਹੂਗੀ ਫਿਰ ਮੈਂ ਕਹਿੰਦਾ ਹੂੰ ਜਿਹੜੀ ਬਿਨਾ ਵਿਚਾਰੇ ਜੀਵਨ ਜਿਉ ਰਹੈ ਨਾ ਹਰ ਹਰ ਤੋਂ ਬਾਅਦ ਇਹ ਗੱਲ ਖੜਕਦੀ ਰਹੂਗੀ ਇਸ਼ਾਰਾ ਕਿਤੇ ਹੋ ਰਿਹਾ ਕਰ ਰਿਹਾ ਉਹ ਇਸ਼ਾਰਾ ਸंसार ਤੀ ਬਿਨਾਂ ਵਿਚਾਰ ਤੋਂ ਜੀਵਨ ਜੀ ਰਿਹਾ ਹੈ ਬਿਨਾਂ ਵਿਚਾਰ ਆਪਣੇ ਵੀ ਗੱਲ ਕੋਈ ਹਾਂਜੀ ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰ ਰਾਏ ਸ਼ਰਨ ਪਰੋ ਹਰ ਰਾਏ ਹਾਂ ਉਕਤ ਸਿਆਣਪ ਸਤਗਲ ਤਿਆਗ ਨਾਨਕ ਦੇਖੋ ਸਿਆਣਪ ਨਾਲ ਉਕਤੀ ਲੱਭ ਲਾਇਆ ਹੈ ਉਕਤੀ ਸਿਆਣਪ ਹੈ ਇਹ ਥੋੜੀ ਭੁੱਲ ਹੈ ਇਹ ਬੋਲਦਾ ਆਏ ਉਕਤੀ ਆਏ ਤੁਹਾਨੂੰ ਭਲੇਖਾ ਲੱਗਿਆ ਮੈਂ ਸਿਆਣਾ ਆਪਣੇ ਆਪ ਨੂੰ ਸਿਆਣਾ ਬਣ ਰਹੀ ਸਿਆਣ ਬਣਾ ਆਪਾਂ ਕਹਿੰਦੇ ਮੈਂ ਉੱਕ ਗਿਆ ਜਿਹੜਾ ਕਹਿੰਦਾ ਉੱਕ ਗਿਆ ਮੈਂ ਭੁੱਲ ਗਿਆ ਇਹ ਉਕਤੀ ਲੱਭ ਦੂ ਉਹਦੇ ਬਣਾ ਉਹ ਚੁੱਕ ਗਿਆ ਭੁੱਕ ਗਿਆ ਚੁੱਕ ਗਿਆ ਉਦੋਂ ਇਹ ਉਕਤੀ ਬਣੇ ਲੱਗਦੀ ਦਾ ਸ਼ਬਦ ਹੈ ਇਹ ਜਿਹੜੀ ਸਿਆਣਪ ਆ ਨਾ ਉੱਤੇ ਆਹੀ ਗਲਤੀ ਹੈ ਤੇਰੀ ਭਲੇਖਾ ਜਣੂ ਵੀ ਵੇ ਜਾਣੂ ਉੱਤੀ ਸਿਆਣਪ ਸਗਲ ਇਹ ਸਾਰੀ ਉਹ ਛੱਡ ਦੇ ਇਹ ਉੱਤੇ ਜਾਣ ਵੇ ਵਿਛੋੜ ਕੇ ਰੱਖਦੀ ਹੈ ਵਿਛੋੜਿਆ ਹੀ ਕਿ ਆਪਣੇ ਪੈਰ ਚੱਲਦਾ ਤਾਂ ਹਾ ਮਨਮੋਹੀ ਕਹਿੰਦੀ ਸਿਆਣਾ ਹੋ ਉਹ ਲੋੜ ਆਉਂ ਜ਼ਿਆਦਾ ਉਹ ਕਹਿਣ ਦੀ ਗੱਲ ਕਰਦਾ ਸੋਧਾਰ ਏ ਪਤਾਂ ਦੇ ਸੰਸਾਰੀਆਂ ਜੋੜ ਕਰਦੇ ਤੇ ਜੋੜਦਾ ਹੀ ਨਹੀਂ ਹੁੰਦਾ ਕੋਈ ਹਰਦੀ ਜੁੜ ਚੱਲਦੀ ਜੁੜੜਾ ਸੱਚਾ ਦੇਖੋ ਜਿਹੜੀ ਬਾਣੀ ਸਮਾਜ ਦੇ ਨੋਟ ਤੋੜ ਦिए ਤੁਹਾਨੂੰ ਬਰਖੇੜ ਡਾਰ ਤੋਂ ਪਰਛੀਰੂਪ ਵਿੱਚ ਛੋੜ ਦिए ਬਿਰਗਰੂ ਡਾਰ ਜੋ ਕੱਲਾ ਘੜਦੀ ਅਸੀਂ ਘਰਵਾਨਾ ਬੜਾ ਆਰਾਮ ਬਣਾਉਂਦੇ ਦਾਏ ਬਲੂ ਨੇ ਹੋਰ ਕੀ ਉਹ ਕੱਲਾ ਖੜਦੀ ਹੈ ਜੇ ਕੁ ਜਿਹਦੇ ਕੱਲਾ ਨਿਕਲੇ ਆ ਕਿਹੜਾ ਲੋਗਾਰੀਤ ਵਿੱਚ ਲੋਗਾਰੀਤ ਨੂੰ ਜਾਂ त्यागਣਾ ਤੱਲਾਣ ਕੱਢਣੀ ਪਊ। ਅਸਾ ਜਾਨਾ ਧਰਮੇ ਲੋਗਾਂ ਰੀਤੇ ਹੁਣ ਸੰਸਾਰੀ ਧਰਮੇ ਲੋਗਾਂ ਰੀਤੇ ਹੀ ਦਾ ਲੋਗਾਂ ਰੀਤੇ ਹੁੰਦੇ ਨੇ ਜਦੋਂ ਜਦ ਕੋਈ ਲੱਗੇ ਉਹਨਾਂ ਕਰੇ ਚਾਰ ਤੇ ਹੁਣ ਤੱਕ ਜਿਹੜੇ ਹੋ ਗਿਆ। ਲੋਕਾਂ ਦੀ ਛੱਡ ਗਿਆ ਨਾ ਉਹ ਇਹਨੂੰ ਆਇਆ ਹੁੰਦਾ ਸੀ ਪਹਿਲਾਂ ਜਦੋਂ ਪਹਿਲਾਂ ਆਇਆ ਸੀ ਉਹ ਲੋਕਾਂ ਦੀ ਸਾਤੋਂ ਦਾ ਗਿਆ ਉਹ ਜਿਹੜਾ ਗੁਰੂ ਆਲਾ ਹੋ ਗਿਆ ਨਾ ਉਹ ਗਿਣਤੀ ਹਾਂ ਮੈਂ ਨਹੀਂ ਲੰਤਾ ਉਹਨਾਂ ਦਾ ਪਹਿਲੇ ਬੰਦੇ ਤੁਸੀਂ ਕਹਿਣਾ ਕਰੂ ਆਜੋ ਸਾਡੀ ਧਰੂ ਬੰਦੇ ਆ ਮਾੜਾ ਮੋਟਰ ਦਾ ਜਾਇਦਾ ਵੀ ਹੈ ਅੱਜ ਵੀ ਅੱਜ ਵੀ ਹੁਣ ਨੂੰ ਤਿਆਰ ਇਹ ਗੱਲ ਕਹਾਈ ਕਿਤੇ ਕਹਾਈ ਉਹਦੀ ਦੁਆਰ ਤੇ ਇਹਦਾ ਮਤਲਬ ਬਾਤਿਆ ਜੀ ਗੱਲ ਹੈ ਮਾਣੇ ਬੋਲੋ ਗਾਈਏ ਗੱਲ ਮਾਂ ਉਦੋਂ ਤੇ ਬੇਅਸਰ ਕਰਦੀ ਗਿਆ ਬੇ ਤੇ ਕੇ ਤੈਨੂੰ ਉਹਦੇ ਨਾਲ ਚੌਥਾ ਉਹਦਾ ਹੈ ਨਹੀਂ ਅਜਿਹੜੇ ਧਾਰਮਿਕ ਹੈ ਨਹੀਂ ਉਹਦੇ ਨੇ ਉਹ ਜੀਵਨ ਉਹ ਟੁੱਟ ਗਿਆ ਸਭ ਤੋਂ ਜ਼ਿਆਦਾ ਰਿੜਕਾ ਹੈ ਸੀ ਉੱਥੇ ਨਾਟਵਰ ਜਾਵ ਕੇ ਔਰਤਾਂ ਨਹੀਂ ਆ ਕੇ ਰੇ ਹਾਂਜੀ ਕਿਤੇ ਔਰਤਾਂ ਨਹੀਂ ਆ ਕੇ ਰੇ ਸਰਪਤ ਇਹ ਕੌਰ ਜੀ ਨਾਲ ਕਾਤਾ ਦਿੰਦਾ ਇਹ ਕਬਰ ਤੇ ਔਰਤਾਂ ਨੇ ਵੀ ਨਾਲ ਚੜਾ ਰਿਹਾ ਹੈ ਜੀਰ ਦਾ ਕਿਰਦ ਜੀ ਇਹ ਕੌਰ ਜੀ ਦੇਖੋ ਚਲ ਕੇ ਵੀ ਦੇਖੋ ਗੁਰੂ ਕਾ ਬਾਲਾ ਦਾ ਕੋਈ ਔਰਦਾ ਹੋ ਇਹ ਗਰਾਉਂਡ ਤੇ ਤੁਹਾਡੇ ਕੋਲ ਵੀ ਆਰਡਰ ਨੂੰ ਰਿਸਵਾਇਆ। ਇਹ ਸ਼ਿਕਾਇਤ ਇੱਥੇ ਹੁੰਦੀਆਂ ਫਿਰ ਨਾਲ ਵਰਦੀ। ਝੋੜ ਨਹੀਂ ਚੱਲਦਾ ਹੁੰਦਾ। ਝੋੜ ਦੇ ਵਿੱਚ ਚੱਲ ਜੂਗਾ। ਕੋਈ ਨਾ ਕੋ ਕਮੀਜ਼ਰ ਹੈ ਇਹ। ਸਾਰਿਆਂ ਹੀ ਕਮੀਜ਼ਰ। ਇਹ ਨੇ ਡੇਰੇ ਤੋਂ ਉਠਵਣਾ ਲਿਆ ਇਹਨਾਂ ਨੇ। ਇਹਨਾਂ ਨੇ ਆ ਵੀ ਜਿਹਨੇ ਦੁਆਨੇ ਚੱਲਦਾ ਧਰਮ ਦੀ ਝੂਠਾ ਜਲਾਦਾ। ਇਹ ਉੱਠ ਕੇ ਵੀ ਚੱਲ ਜੂ ਝੋੜੀ ਚੱਲਦਾ ਹੁੰਦਾ। ਕਿਤੇ ਵਰਗੀ ਪੱਕਾ ਘਰੀ ਜਣੇ ਨੂੰ ਛੋੜਨੋ ਉਹ ੱਡੇ ਗਰਥੇ ਕੇ ਪੈਰੀ ਧੂਰ ਦੇ ਇੱਕ ਗੱਲ ਨਾਲ ਸਾਰੇ ਕੱਟੇ ਜਾਂਦੇ ਦਸ ਖਤਮਾ ਲਿਖੀ ਦੀ ਕਰ ਕੋਈ ਆਰਟੀਕਲ ਲਿਖਿਆ ਥੋੜਾ ਜੇ ਪਰਦਾ ਦਿਖਾਇਆ ਉਹ ਤਾਂ ਕਿਹੜਾ ਆਦਮੀ ਪਤਾਸਿਆਂ ਨੂੰ ਤਾਂ ਪਤਾਸਿਆਂ ਦੇ ਮਿੱਠੇ ਪਰ ਨਾਮ ਦੇ ਨੂੰ ਬਰਾਬਰ ਬੁਲਦਾ ਸਾਫ ਦਾ ਮਿੱਠਾ ਜੀਭ ਨੂੰ ਚੜਦਾ ਦਿਨੇ ਪਤਾ ਹੈ ਪਤਾਸੇ ਦਾ ਗਰਮੂਖ ਹੋਵੇ ਗਰਮੂਖ ਹੋਵੇ ਦੋਹਾਂ ਵਿੱਚ ਰਹੇ ਆਪਣਾ ਬੂਹਾ ਬੂਹਾ ਕੋੜਾ ਬੂਹਾ ਬੂਹਾ ਰਹਾ ਮੈਂ ਤੋ ਉਰਪੋਦਾ ਨਾ ਕਰਲਾਤਾ ਵਈ ਇੰਨਾ ਕੁੱਤੇ ਹੀ ਜਿਹੜਾ ਬੰਦਾ ਆਵੇ ਦੀ ਜਾਇਆ ਕਰਨ ਬਹਾਰ ਰੋ ਝੱਕਦਾ ਉੱਤੇ ਬਾਅਦ ਤੇ ਕਿਵੇਂ ਹੋ ਸਕਦਾ ਜਿਹੜਾ ਮੈਨੂੰ ਥਿੱਤੀ ਦਲਦਾ ਹੀ ਨਹੀਂ ਪਤਾ ਪੀਪਤਾ ਸੇ ਦਾ ਉਹ ਤੇ ਕੁਝ ਕਿ ਜਿਹੜਾ ਘਰੀ ਦੁਨੀਆ ਦਾ ਹੈ ਜਿਹੜਾ ਘਰੀ ਦੁਨੀਆ ਦਾ ਕੋਈ ਜੀ ਨਾਗਰੀ ਦੁਨੀਆ ਜਿਹੜੀ ਕੌੜੀਰ ਮਿੱਟੀ ਹੈ ਇੱਕੋ ਜੀ ਜਿਹੜਾ ਘਰੀ ਦੁਨੀਆ ਜੋ ਅਹੀ ਕੌੜੀ ਹੁੰਦੀ ਧੜੇ ਨੂੰ ਉਹ ਧੜੇ ਨੂੰ ਮਿੱਟੀ ਕਰ ਦੋ ਧੜੇ ਚੀਜ਼ ਕੋਈ ਰਾਖਸ਼ ਸ਼ਰਾਪੀ ਤੇ ਦਸਾਇ ਮਰਾ ਅਖੇ ਸ਼ਰਾਬ ਪੀਤੇ ਨਹੀਂ ਸੀ ਧੋਖ ਰਮ ਰਹੀ ਹੋ ਗੁਰੂ ਕਨ ਦਾ ਅਖੀਰ ਨੂੰ ਉੱਪਰ ਤੋਂ ਲੱਗਦਾ ਹੀ ਕੋੜੇ ਸ਼ਰਾਬ ਪਿੱਠੇ ਲੱਗਦੀ ਉੱਪਰ ਬਾਣੀ ਦੇ ਸੋਚੀਤੀ ਉਸ ਗੱਲ ਉਸ ਨੇ ਸਭ ਜਿਹੜੇ ਗੱਲ ਕੀ ਹੈ ਬਰਾਬਰ ਜਿਆਦਾ ਕਹਾਣੀ ਬਣਾਈ ਸੀ ਸੁਬਦਰ ਲੜਕਰ ਦੀ ਉਹ ਕਹਾਣੀ ਇਹਦੇ ਚ ਕਹਿਤੀ ਅਮਰ ਤੁਹਾਡਾ ਰੱਖਿਆ ਪਿੱਠੀ ਜਦੋਂ ਬੁੱਧਰ ਢੜਕਲ ਦੀ ਕਹਾਣੀ ਕਹਿਤੀ ਤੁਹਾਨੂੰ ਮੋਟਾ ਨਾ ਦੀ ਸ਼ਰਾਬ ਤੁਹਾਨੂੰ ਅਤੇ ਅਸਾ ਅਮਰਦ ਦੀ ਸ਼ਰਾਬ ਹਰ ਕੀ ਜੇਦੋ ਚ ਉਡੋਣਾ ਹੈ ਆ ਗਈ ਚਲੋ ਕੁਝ ਵੀ ਹੋਏ ਉਡੋ ਜਰਾ ਅਮਰਦ ਦੇ ਪਟਕੇ ਦਾ ਲੋ ਆਹ ਨੇ ਬੜੇ ਬਿਹਾਵ ਰੋਣ। ਉਪਰਤਾ ਪੀ ਲਿਆ। ਇਹਨਾਂ ਨੂੰ ਪੀਂਦੇ ਨਹੀਂ ਧੱਕੇ ਤਾਂ। ਹਾਂ, ਧੋਖਾ ਕੀਤਾ। ਇਹਨਾਂ ਦੀ ਨੇ ਧੋਖੇ ਨਾਲ ਪਾਇਆ। ਫਿਰ ਉਹ ਅੰਗਰ ਪੀ ਗਿਆ ਕੇ। ਪੀ ਲਿਆ ਅੰਗਰ ਦੁੱਧ ਕੋਲ ਲੱਕ। ਜਦੋਂ ਪਤਾ ਲੱਗੋ ਤਾਂ ਪੀ ਗਿਆ। ਉਹ ਅੰਗਰ ਇਹਨਾ ਨੰਬਰ ਤੋਂ ਉਬਰਣੀ ਜਿਹੜਾ ਪਰਤੂ ਦਾ ਇਹਦਾ ਨੰਬਰ ਕਦ ਤੱਕ ਆਣਾ ਪਾੜੀਓ ਸੀ ਜਿਹੜਾ ਰਾਖੇ ਨੂੰ ਵੀ ਸਾਡੇ ਆਲਾ ਉਬਰਤਾਰੇ ਤਾਂ ਤਸ ਕਰ ਨਹੀਂ ਲੇਵੇ ਤਸ ਕਰ ਤਾਂ ਨੂੰ ਕਰ ਉਹ ਤਾਂ ਛੱਡ ਜਾਂਦਾ ਇਹਨੂੰ ਉਹਦਾ ਤਾਂ ਗਾਹਾਂ ਤੇ ਦੀਏ ਜੇ ਜੰਮਤ ਤੋ ਦਾ ਤਰ੍ਹਾਂ ਦੇ ਤੋਂ ਕਹਾ ਕੇ ਨਿਕਲ ਉਹਨਾਂ ਨਾਲ ਤੁਰਕੀ ਤੇ ਇਹਨਾਂ ਕਰਕੇ ਕਿਆ ਉਪਰਤ ਗੌੜਾ ਪਿੱਛਾ ਪਿੱਛੀ ਸੱਤਾਂ ਜਿਹੜਿਆਂ ਨੂੰ ਵੀ ਕੁਰਬਾਨੀ ਦਾ ਅੰਮ੍ਰਿਤ ਪੌੜਾ ਲੱਗਿਆ ਉਹ ਸਾਰੀ ਰਾਤੇ ਸੀ ਚਾਹੇ ਉਹ ਬ੍ਰਾਹਮਣ ਸੀ ਉਹ ਸ਼ਰਾਬ ਨੂੰ ਦੇ ਮਾਇਆ ਨੂੰ ਜਿਹੜੇ ਮਾਇਆ ਦੇ ਅੰਮ੍ਰਿਤ ਨੇ ਵਿਖਿਆ ਦੇ ਅੰਮ੍ਰਿਤ ਨੇ ਕਿਆ ਅੰਮ੍ਰਿਤ ਕਰੇ ਵਿਖਿਆ ਉਹਦੇ ਜਿਹੜੀ ਚੀਜ਼ ਬਾਇਆਦੀ ਬੜੀ ਹੋਈ ਹੈ ਪਾਣੀ ਬਾਇਆਦੀ ਪਤਾ ਸੇ ਬਾਇਆਦੀ ਇਹ ਅਮਰਤ ਵੀ ਵਿਖਿਆ ਗਿਆ ਇਹ ਬੇਸਿਕਲੀ ਪਾਣੀ ਦੀ ਗੱਲ ਹੈ ਦਸਾਲੇ ਅਮਰਦੀ ਗੱਲ ਹੈ ਹਾਲੇ ਅਮਰਦੀ ਗੱਲ ਹੈ ਬਾਹਰਿਆ ਮਦਦ ਪਾਣੀ ਅਬਰਤ ਹੈ ਪਰ ਇਹ ਵਿਚਾਰ ਨੇ ਸਾਰੇ ਕੀ ਅਮਰਤ ਹੈ ਜਿਹੜੇ ਬਿਖੇ ਆਏ ਨੇ ਉਹ ਜਿਹੜਾ ਅਮਰਤ ਜਿਹੜਾ ਕਾਰੀ ਦੁਨੀਆ ਅਮਰਤ ਹੈ ਅਮਰਤ ਉਹਨਾਂ ਅਮਰਤ ਇੱਕ ਹੈ ਦੂਜਾ ਅਮਰਤ ਦੇ ਬੰਦੇ ਹੋਏ ਨੇ ਪੰਡਤ ਨੂੰ ਬਖੇ ਕਿ ਕਹੀ ਹੋਈ ਹੈ ਘਰਮਾਤ ਦ੍ਰਿਸ਼ਟੀਕੋਣ ਤੋਂ జ్ఞానయ دے દ્રષ્ટિકોણ ਤੋਂ ਜਿਹੜੇ ਗਿਆਨवान પુરુਸ਼ ਦੇ ਉਹਨਾਂ ਦੇ દ્રષ્ટિકੋਣ ਤੋਂ ਇਹ ਵਿખ્યા ਦੇ ਅਮਰਤ ਵਿખ્યા ਨੂੰ ਕਹੇ ਜੀ ਵਿખ્યા ਅਬਰਤ ਇੱਕ ਜਿਹਦੇ ਨਾਲ ਬੰਦਾ ਮਰ ਜਾਂਦਾ ਤੇ ਸੰਸਾਰੀ ਵਿખ્યા ਦੇ ਨਾਲ ਉਹਨੂੰ ਕਹੇ ਵੀ ਇੱਕ ਹੈ ਸੰਸਾਰੀ ਵਿખ્યા ਲਈ ਹੋਤੇ ਤੇ ਅਮਰਤ ਵੀ ਸੰਸਾਰੀ ਲੈਣੇ ਜਿਹੜੇ ਆਪਾਂ ਗੱਲ ਉਹ ਕਿ ਇਹ ਕਿਹ ਜਿਹੜਾ ਉਹ ਦੁੱਧ ਇੱਕ ਹੈ ਨਹੀਂ ਬਈ ਇਹ ਹੈ ਬੜੂ ਉੱਪਰ ਹੈ ਸਮਝੀ ਕਿ ਹੈ ਅਬਰਤ ਦੇ ਤੱਤੇ ਨੂੰ ਉਕੜਉਂਦਾ ਬਾਹਰ ਦੀ ਇਹਦੀ ਵਿਖਿਆ ਦੀ ਓਏ ਮੌਤ ਕਰ ਦਿੰਦੀ ਹੈ ਤੇ ਅੰਮਲ ਜਿਹੜਾ ਦੁੱਧ ਬਣ ਉਹ ਫੁਰ ਗਿਆ ਕਿ ਉਹ ਇੱਕ ਦੋ ਚੀਜ਼ਾਂ ਨੂੰ ਫੁਰ ਗਿਆ ਅਮਰਤਾਰ ਵਿਖੇ ਕੋਈ ਹੈ ਉਹ ਕੀ ਕਹਿੰਦਾ ਕੋਹਰ ਆ ਇਹ ਜਿਹੜੀ ਮਾਇਆ ਹੈ ਮਾਇਆ ਜਿਹੜੀ ਹੈ ਸਾਰੀ ਉਹ ਬੇਫਿਕਰ ਇਸ ਕਰਕੇ ਬੇਫਿਕਰ ਇਹ ਜਦੋਂ ਬਹੁਤ ਪੂਰੀ ਹੋ ਗਈ ਜਬਦ ਕਿਹੜਾ ਮਨਮਾ ਕਿਹੜਾ ਵਰ ਇਸ ਵੇਖ ਦੂਹੀ ਵਰਤ ਬੰਦ ਨੇ ਇਸ ਭਾਇਆ ਦੇ ਆਪਰ ਤਰੂ ਵਰਤ ਬੰਦ ਕੇ ਖਾ ਰਿਹਾ ਹੈ ਫੀਲ ਦੇ ਤੇ ਚੰਦੇ ਰੋ ਹੂੰ ਇਹ ਤਾਂ ਉਹਨੇ ਤਾਂ ਫਿਰ ਭੱਵੇਂ ਚਿਰ ਮਰ ਜਵੇ ਇਹ ਕੋਈ ਟਾਈਮ ਨਹੀਂ ਖਾਤੇ ਸਾਹ ਦੀ ਵਰਤ ਵੀ ਖਾ ਕੇ ਮਰਨੂ ਵੀ ਟਾਈਮ ਲੱਗਦਾ ਬਸ ਖਾਤਾ ਬਿਗੈ ਯਾਰ ਸੰਸਾਰ ਦੀ ਵਿਖਾਈ ਸੋਨੇ ਤੇ ਸੋਹਰੇ ਤੇ ਜਿਹੜੇ ਕਹਿੰਦੇ ਕੋਈ ਕੋਈ ਕੋਈ ਕੋਈ ਅੰਤਰ ਕਿਹਦਾ ਹੈ ਕਾਨਕ ਕਟ ਕੇ ਜਲਤ ਰੱਖਦੇ ਸੀ ਜਿਵੇਂ ਸੂਰੇ ਦਾ ਕੜਾ ਬਣਿਆ ਹੋਇਆ ਚਾਹੇ ਉਹਨੂੰ ਸੋਦਾ ਕਰ ਲੋ ਚਾਹੇ ਲੋ ਚੀਜ਼ ਹੈ ਬਿਖਤੋ ਬੜਿਆ ਹੈ ਉਬਰਤ ਵੀਰ ਬੈਰੋ ਜਾਇਆ ਬਦਕਾਲੋ ਗੰਨ ਇੱਕੋ ਹੀ ਬਿਖਤ ਕੀ ਸੈਸ ਜਾਇਆ ਆਇਆ ਜਿਹੜੀ ਮੰਨ ਦੇ ਲੈਵਲ ਦੀ ਜਿਹੜੀ ਜੋ ਮਾਇਆ ਹੋਵੇ ਬਸ ਬਿਖ ਪਾਇਆ ਆ ਤਾਂ ਜ਼ਹਿਰ ਉਹਨ ਜਿਹੜੀ ਵੇਖ ਜਾਂ ਅਮਰਦਾ ਜਣਾ ਬਾਹ ਵੇਖ ਜਾਂ ਖਾਰਿਆ ਮਾਇ ਖਾਰਿਆ ਖਾ ਤਾਂ ਸਰੀਰੇ ਦੇ ਹੈ ਉਥੇ ਕਿਆ ਮੰਨ ਤੋਂ ਆਪਣੇ ਆਪ ਨੂੰ ਬਖਰੀ ਦਿਨ ਫੋੜ ਅਬਰਤ ਉਬਰਤ ਨਾ ਖਾਣ ਦਾ ਕਾਰਨ ਨਹੀਂ ਉੱਥੇ ਅਮਰਤ ਨੂੰ ਗਿਆਨ ਅਮਰਤ ਨੂੰ ਕਿਹਾ ਤੇ ਅਮਰਤ ਸਾਡੇ ਕਿਹਾ ਕਿ ਕਿਉਂ ਨਹੀਂ ਖਾਂਦਾ ਵੀਰ ਘੋੜੇ ਤੇਰੀ ਜਿਸ ਤਰੀਕੇ ਤੋਂ ਹੈ ਥੋੜਾ ਜਾ ਕੇ ਗੁਰਦੁਆਰੇ ਅਰਦਾਸ ਕਰਦਾ ਬਦੋਂ ਦੀ ਕਿਸੇ ਹੱਦ ਹੈ ਕਿ ਕਰ ਕੰਧ ਉੱਦ ਰਿਹਾ। ਇੱਛਾ ਜਿਹੜੀ ਰਸ ਹੈ ਅਦਰ ਭੁੱਖਾ ਜਿਹੜੀ ਮਾਇਆ ਦੀ। ਮਾਇਆ ਦੀ ਭੁਖਰੀ ਹੈ। ਕਿੱਥੇ ਮਰਦਾ ਦੀ ਭੁਖਰੀ। ਜੇ ਭੁੱਖਾ ਰਗਾ ਦਵੀ ਜੋ ਨੂੰ ਪ੍ਰਾਪਤ ਹੁੰਦੀ ਹੈ ਮਾਇਆ। ਉਹ ਇਹਨੇ ਖਾਦੀ ਹੋਈ। ਫਿਰ ਵੀ ਭੁਖਰੀ ਉੱਤਤੀਛਾ ਇਸ ਘਟੇ। ਜੋ ਖਟੇ ਉਹ ਖਾਲੇ। ਉਹ ਖੋਰਵਾ ਦੀ ਉਸਤਤਾ ਜੋ ਚੀਜ਼ ਪ੍ਰਾਪਤ ਹੋ ਉਹਨਾਂ ਖਲ ਉਹ ਖੁਰਬਾ ਦੀ ਸੈਕਟੇਲਾ ਕੋਰਟਾ ਨਾ ਤ੍ਰਿਪਤਰਾਵ ਦਾਇਆ ਪਾਛੇ ਪਾਵ ਉਹ ਕੱਟੀ ਹੀ ਥੀ ਬਖੁਰਬਾ ਦੀ ਤ੍ਰਿਪਤਰਾਵ ਜਦੋਂ ਖਾਦਾ ਲਈ ਦੋ ਪਤ੍ਰਿਤੀ ਗਈ ਦੋ ਸਗੋ ਖੁਰਬਾ ਜਿਉ ਪਾਵ ਕੀਦਰ ਦੇ ਇਤਰਾਪਾ ਇਹ ਸੰਤ ਪਰ ਖਾਤਾ ਹੀ ਗਿਆ ਨਾ ਉਹ ਮਤਲਬ ਇਹਵੇਂ ਖਾਉ ਉਹ ਤੇ ਮਖਮਲ ਬਣੀ ਬਈ ਖਾਣਾ ਮੰਨਿਆ ਜਾਊਗਾ ਜਣੀ ਗੇ ਖਾਣੇ ਵੀ ਤ੍ਰਿਪਤੀ ਹੋ ਰਹੀ ਹੈ ਨਹੀਂ ਹੋ ਰਹੀ ਉਹ ਗੱਲ ਅਲੱਗ ਹੈ ਉਹ ਗੱਲ ਜਣੀ ਕਿ ਆਪਣੇ ਬਰੁਧ ਦੇ ਤਰਕ ਤੋਂ ਸਹੀ ਹੈ ਸਹੀ ਹੈ ਥੋੜਾ ਜਿਹਾ ਤਰਕ ਤੋਂ ਦਫੇਰ ਹੋ ਜਾਂਦਾ ਹੈ ਬਚਤ ਹੀ ਬਹੁਤ ਇੱਕ ਵਾਰ ਸਕੂਟਰ ਤੋਂ ਚਾਰ ਬਾਅਦ ਫੇਰ ਹੋਰ ਹੁੰਦਾ ਪ੍ਰਾਪਤ ਕਰਕੇ ਸਭ ਚਾੜ ਤਾਂ ਨਾ ਜਦੋਂ ਨਹੀਂ ਹੁੰਦੀ ਉਦੋਂ ਦਾ ਕਰੇਜ ਬਣਿਆ ਰਹਿੰਦਾ ਜਦੋਂ ਹੁੰਦੀ ਹੈ ਜੀ ਉਹਦੇ ਕਿ ਨਹੀਂ ਚਾੜਾ ਮੇਰੀ ਉਹ ਚਾੜ ਵੱਡੀ ਮੰਗ ਕਿਵੇਂ ਪੈਦਾ ਹੋਵੇ ਖੇਡਦਾ ਫਿਰ ਵੱਡਾ ਤਾਂ ਜਾਵੇ ਪਰਚਿਆ ਹੋਵੇ ਵੱਡੇ ਦੀ ਡਿਮਾਂਡੇ ਆਤਾ ਨਹੀਂ ਪਾਇਆ ਨਾ ਨਹੀਂ ਬੋਧਾ ਚਰੇ ਹੈ ਜੁੜਿਆ ਰਹੇ ਸਰਦ ਮੈਂ ਮਾਇਆ ਨੂੰ ਬਹੁਤਾ ਜਿੰਦ ਦੇ ਵਿੱਚ ਨਾ ਆਤਾ ਅੱਗੇ ਸੋਕੇ ਅੱਗੇ ਸੋਕੇ ਪਾਇਆ ਨਾ ਕੋਤੇ ਚਰਦਾ ਮਾਇਆ ਜਹਦਾ ਕੀ ਟੈਸਟ 55 ਜੀ ਹਮਰੀ ਚਤਵਨੀ ਹਰ ਪਾਸ ਜਨਨ ਹੈ ਔਰ ਕੋਈ ਨਿੰਦਕ ਕਰਾਇ ਹਰ ਜਨਕੀ ਪਰ ਦਾ ਕਹਾ ਇੱਕ ਕਦੇ ਨਹੀਂ ਮੰਨਣਾ ਜਿਹੜੀ ਆਪਾਂ ਚਤਵਧਿਆ ਅਸੀਂ ਚਤਵਧਿਆ ਦੇਖੋ ਜਿਹੜਾ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਉਹ ਸਾਡੀ ਖੇਤ ਥੋੜੀ ਤਰੇ ਆਨੋ ਕੋੜਾ ਜਦੋਂ ਚਾਹੁੰਦਾ ਰ ਵੀ ਮੈਂ ਤਾਂ ਮੋੜਨਾ ਕਹਿੰਦਾ ਉਹਨੂੰ ਪਹਿਲੇ ਬਤਾਇਆ ਜਾਂਦਾ ਵੀ ਰੋਜ ਆਏ ਤੇ ਐ ਰਾਂ ਰੋਜ ਜਾਂਦੇ ਤੇ ਉਹ ਖੇਤ ਦੇ ਵਿੱਚੋਂ ਲੈ ਕੇ ਆਉਂਦੇ ਤੇ ਪੱਠੇ ਅੱਜ ਪੱਠੇ ਤੋਂ ਤਾਂ ਕਹਿ ਬੋ। ਕੋੜਾ ਦੁਕੀ ਤੂ ਪਹਿਲੇ ਅਲਰਟ ਹੋ ਜਾਂਦੇ। ਖੇਤ ਤਾਂ ਪਤਾ ਨਹੀਂ ਕਿ ਕਦੋਂ ਖੇਤ ਲੈ ਪਹਿਲੇ ਪਤਾ ਲੱਗ ਜਾਂਦਾ ਕਿ ਕਿੱਥੇ ਹੋਏਦੋਂ ਵੀ ਕੌਣ ਨੇ ਕਿਹਦਾ ਪਤਾ ਪਿਆ ਇਹ ਦੋਤਰੋਂ ਆ ਜਾਊਗਾ ਇਹ ਤਾਂ ਰੋਜ ਜਾਂਦਾ ਪਹਿਲਾਂ ਉਹਨੂੰ ਪਹਿਲੇ ਹੀ ਪਤਾ ਜਾਂ ਦੋਤਰੋਂ ਜਾਂਦਾ ਇਸ਼ਾਰਾ ਕਰਦਾ ਫੇਰ ਚਲੋ ਠੀਕ ਹੈ ਭਾਈ ਆਖਰੋ ਤਾਂ ਰੋਜ ਜਾਂਦਾ ਵੀ ਮੈਨੂੰ ਤਾਂ ਬਹੁਤ ਕੁਝ ਵੀ ਪਤਾ ਹੁੰਦਾ ਰੋਜ਼ ਵਰਨਾ ਤਾਂ ਇਹੀ ਹੁੰਦੀ ਹੈ ਕਿ ਜਿੱਥੇ ਉਹ ਲੈ ਜਾਂਦਾ ਉਹ ਤੁਰ ਜਲ ਜਾ ਕੇ ਖੜਾ ਉੱਥੇ ਉਹਨੂੰ ਕਰ ਦਿੰਦਾ ਹੈ ਵੱਢ ਕੇ ਫਿਰ ਉਹਨੇ ਹਾਂ ਕੇ ਦੂਏ ਦਰ ਤਾਂ ਆਵੇ ਚਲਾ ਜਾਂਦਾ ਇਹੋ ਜਿਹਾ ਕੁਝ ਹੁੰਦਾ ਰਹਿੰਦਾ ਜਿਵੇਂ ਇੱਕ ਸਹਾਰਦਾਰ ਕੋਲ ਇਹਦਾ ਫਰਕ ਹੈ ਫਰਕ ਹੈ ਐਵੇਂ ਜੀਵਦਾ ਰਹੋ ਦਾ ਫਰਕ ਸਾਡੀ ਜਿਹੜੀ ਚਿਤਵਟਰੀ ਹੈ ਉਹ ਪਹਿਲੇ ਤੱਕ ਰਹਿ ਗਈ ਕੋਕਾ ਭੁਤੀ ਕਾ ਕਮ ਕਰਵਾਉਂਦੇ ਸੀ ਜਿਆਦਾ ਸੀ ਕਪੜਾ ਨਹੀਂ ਜੋੜਦੇ ਆ ਦੋ ਹੱਥਾਂ ਪਾਵਰੋਤੀ ਕਮ ਕਰਦੇ ਇਹ ਕ ਐਨੂ ਜਿਹੜਾ ਦਦਾ ਦਾ ਦੂਆ ਹੈ ਦੂਤਾ ਜੇ ਕੈਰੂਦੂਤਾ ਦੂਆ ਹੈ ਦੂਤਾ ਕੋਈ ਸਲਾਹ ਕਰਕੇ ਦੂਤਾ ਨੂੰ ਕਿਹੜਾ ਦੋਲ ਨਹੀਂ ਇਕਾ ਵੀਰੇ ਬਸ ਤੂੰ ਹੋਰ ਸਮਝੇਗਾ ਕਿਹੜਾ ਬਜਟ ਆ ਰਿਹਾ ਕਿਹੜਾ ਬਜਟ ਆ ਰਿਹਾ ਇਸ ਕਰਕੇ ਜਿਹੜਾ ਬੰਦੇ ਚਤਵੰਡ ਦੇ ਮਨੂ ਭਲੇ ਖਾ ਹੋਵੇ ਮੇਰਾ ਉਰ ਪਤਾ ਨਹੀਂ ਬੁੱਦੀ ਤੇ ਪਿਛੇ ਕੋਈ ਆ ਚਤਵੰਡ ਆੜੀ ਉਹ ਜ਼ਰਬੀ ਜੁੜੀ ਹੈ ਪਿਛਲੇ ਪਾਸੇ ਜਲੋ ਇਧਰ ਨੂੰ ਰੋੜਾ ਆਉਂਦਾ ਰੋੜਾ ਬਦਲਾਂ ਇਧਰ ਉਹ ਦੂਆ ਬਸ ਦੇ ਦਿੰਦਾ ਜੇ ਕੋਪਾ ਸਿਰਫ ਕਈ ਵਾਰੀ ਕੋਪਾ ਸਿਰਫ ਬਸੀ ਨਹੀਂ ਗੇੜਦੇ ਕੋਪਾ ਸਿਰਫ ਦੋ ਹੱਥਾ ਲੱਗਦਾ ਉੱਥੇ ਐਂ ਕਰੀਏ ਪੁੱਠੇ ਨੂੰ ਫਿਰ ਉੱਥੇ ਬਸੀਤਾ ਜਲਦੀ ਇਸ ਕਰਕੇ ਸਮਝ ਨਹੀਂ ਆ ਰਿਹਾ ਮਨ ਦੀ ਤੁਸੀਂ ਕਹਿੰਦੇ ਆਏ ਕਰਦੇ ਕਰਦੀ ਹੈ ਕਿਉਂ ਕਰਦੀ ਹੈ ਇਹਦੇ ਨੇ ਸਮਝ ਚਾਉ। ਤਾਂ ਗੱਲ ਵੀਰ ਮੈਂ ਜਦ ਦੀ। ਇਹ ਅਸਲੀ ਪ੍ਰੋਬਲਮ ਮੰਦੀ ਹੈ। ਬੰਦੀ ਪ੍ਰੋਬਲਮ ਹੋਰੀ ਮੰਦੀ ਪ੍ਰੋਬਲਮ ਹੈ। ਬੰਦੀ ਪ੍ਰੋਬਲਮ ਹੈ। ਬੋੜਾ ਹੋਣਾ ਬੇਚਾਰਾ ਬੋੜਾ ਵੀ ਹੈ। ਨੰਨੇ ਬੋੜੀ ਸੀਗਾ ਇੰਨ੍ਹ ਦਿਨ ਦਾ ਬਿਸ਼ੇ ਹੈ ਸਭ ਜਿਹੜੇ ਬੈਠੇ ਚਿਤਵਨੀ ਹਾਰ ਤੋਂ ਜਾਨਣਾ ਹਰ ਜਨ ਕੀ ਸਭ ਕਾ ਕਹਿਆ ਇੱਕ ਤਨ ਨਹੀਂ ਮੰਨਾਂ ਇੱਥੇ ਵੀ ਤਾਂ ਅਰਦਾਸ ਕੀਤੀ ਜਿਹੜੇ ਜਨਤੀ ਕਰਦਾ ਉਹ ਕੋਈ ਨਿੰਦ ਗੁਰੂ ਨੇ ਹਰ ਜਾਣਦੇ ਉਲਦੀ ਦਿੱਤਾ ਹੈ ਜਿੱਤੇ ਹਰ ਜਾਣ ਕੀ ਦਿੱਤਾ ਹੈ ਉਹ ਗੁਰੂ ਕਰ ਦਿੱਤੇ ਦੀ ਗੱਲ ਹੈ ਕਿਹਾ ਗੁਰੂ ਦੀ ਹੈਗੇ ਉਹ ਹਰ ਨੇ ਹਰ ਜਾਣ ਜੋ ਕਰ ਦਿੱਤੇ ਕਰੇ ਹਰ ਜਾਣ ਹਰ ਜਾਣ ਅਜਿਹਾ ਗੁਰੂ ਕਾ ਗੱਦੀ ਉਹਦਾ ਬੰਦੈ ਮੇਨ ਮੇਨ ਨੁਕਤਾ ਦਈਆਂ ਬਟਾ ਲੁਕਤਾ ਹੈ ਹਰ ਹਰ ਜਨ ਦੋਏ ਹੈ ਕਾ ਉਹਦਾ ਹਰ ਵੇਲੇ ਗੁਰੂ ਦਾ ਅੱਗੇ ਬੈਠਾ ਹਰ ਗੁਰ ਤੇ ਬਰਾਬਰ ਹੈ ਹਰ ਹਰ ਗੁਰਪੁਰ ਗੁਰਪੁਰ ਹਰ ਹਰ ਗੁਰਤਾ ਕੋਈ ਆਰ ਵੀਦਾਰ ਹੋਵੇ ਕੋਈ ਕੀਤਾਰ ਹੋ ਗੁਰੂ ਤੋਂ ਅੱਗੇ ਬੈਠੇ ਗੁਰੂ ਜਿਹੜਾ ਹੈਗਾ ਗੁਰੂ ਸਰਬਰਥ ਹੈ ਸਾਰੇ ਜੀ ਯਾਤ ਦਾ ਦਾ ਹੈ ਗੁਰੂ ਤਾਂ ਪਰਮੇਸ਼ਰ ਕੋਲ ਸਾਰੇ ਜੀ ਯਾਤਰੂ ਉਹ ਸੇਹ ਦੇਣ ਵਾਲਾ ਰਾਧਾ ਸੁਲ ਵਾਲਾ ਕਾਂਤ ਦੇਣ ਵਾਲਾ ਪੌੜੀ ਚੜ੍ਹੋਲ ਵਾਲਾ ਸਭ ਕੁਝ ਦੇਣ ਵਾਲਾ ਦਾਨਕ ਦੇ ਜੇ ਸਰਦਾਰ ਦਾ ਆਦਿ ਜੀ ਨੂੰ ਹਰ ਜਾਤੀ ਦੇ ਸਰਦਾਰ ਤੇ ਨਹੀਂ ਸਕਦਾ ਦੱਸ ਸਕਦਾ ਉਹ ਦੇ ਸਕਦਾ ਉਹ ਉੱਤਰ ਬੈਠਾ ਨਾ ਤੇ ਉਹ ਸਕਦਾ ਜੋ ਜਿਹਦਾ ਕਨੈਕਸ਼ਨ ਉੱਧਰ ਹੈ ਹਰ ਜਨ ਦਾ ਕਨੈਕਸ਼ਨ ਬਾਹਰੋਂ ਉੱਧਰ ਕੋਈ ਨਹੀਂ ਉਹ ਦੇ ਵੀ ਸਕਦਾ ਦੱਸ ਵੀ ਸਕਦਾ ਉਹ ਦੱਸ ਵੀ ਸਕਦਾ ਦੇ ਵੀ ਸਕਦਾ ਦੱਸ ਸਕਦਾ ਕੋ ਕਨੈਕਸ਼ਨ ਬਾਹਰ ਦੀ ਅੰਦਰ ਦੀ ਦਾ ਹੈ ਉਹ ਤਾਂ ਅੰਦਰ ਦੀ ਗੱਲ ਹੈ ਕਿ ਉਹ ਸਾਰੇ ਉਹ ਬਾਹਰ ਨਹੀਂ ਲਾਈਟ ਹੈ ਸਾਡੇ ਸਾਨੂੰ ਲਾਈਟ ਦੇ ਸਕਦੀ ਆ ਉਹ ਸਾਡੀ ਲਾਈਟ ਹੀ ਕਰ ਸਕਦੀ ਉਹ ਜਿਹੜੀ ਸਪੀਡ ਲਾਈਟ ਨਹੀਂ ਜਲ ਸਕਦੀ ਸਾਡੀ ਲਾਈਟ ਕਬੀ ਜਲ ਦੁੱਤੀ ਅੰਦਰੋਂ ਦੀ ਕਨੈਕਸ਼ਨ ਇਹ ਅੰਦਰੋਂ ਦੀ ਗੱਲ ਇਹਦਾ ਦੋ ਨੋ ਜੀਦਾ ਇਹਦੇ ਨਾਲ ਕਿਰਖਰ ਤਾਰਾਂ ਜਿਹਾ ਆਕੇ ਉਹ ਇੱਥੇ ਚੰਨ ਕਰੂ ਇਹਦੇ ਬੀਤ ਉਹਦਾ ਅੰਦਲੀਆ ਤਾਰਾਂ ਚ ਕਿਰਖਰ ਕੇ ਜਨ ਸਟਰੀਟ ਲਾਈਟ ਆਹ ਜਿਵੇਂ ਬਹਾਲੀ ਸਟਰੀਟ ਹੋ ਜੂ ਉਹ ਜੇ ਤੁਸੀਂ ਦਰਵਾਜ਼ੇ ਖੜਕੀਏ ਖੋਲਦੋ ਖੜੋ ਹੁੰਦਾ ਦਰਬੀਅ ਇਹ ਤੂੰ ਬੰਦ ਕਰ ਲੈ ਸਭਾ ਲਾਈਟ ਜਗਦੀ ਦੇਖ ਕੇ ਤਰੂ ਨਹੀਂ ਕਿੰਦਾ ਲੱਗਿਆ ਚਾਹਣੂ ਤੂੰ ਇਹ ਆਪਣੇ ਬੰਦ ਕਰ ਲੈ ਤੇ ਰੌੜਾਈ ਦੀ ਕਈ ਹੋਰ ਬਾਣੀ ਛੁੱਟ ਕੇ ਬੂਹੇ ਬੰਦ ਕਰ ਲੈ ਤੇ ਰੋ ਸੁਣ ਕਿਉਂ ਬੂਹੇ ਬੰਦ ਕਰ ਲੈ ਸੁਣ ਸੁਣੀ ਨਹੀਂ मेरी लगी पूरी लगी भजन दर्शन करियो ऐली गई है बाबा मेरी इच्छा है कि पूरी जानू भर दूं मेरी इच्छा की बनूं मैं लाभ ले सकता हूं अपनी इच्छा अनुसार ये इच्छा की सदी लाभ दिला सकता हूं ਉੱਤਰ ਦੀ ਗੱਲ ਹੋਰ ਹੈ ਉੱਤਰ ਦਾ ਕਈ ਵਾਰ ਸਾਡੂ ਪਤਾ ਨਹੀਂ ਉਹਦਾ ਸਾਡੀ ਬੁੱਧੀ ਦੇ ਉੱਪਰ ਦੀ ਗੱਲ ਐ ਸੋਚ ਇਹ ਜੀ ਗੱਲ ਇੰਨਾ ਚਿਰ ਦੀ ਭੁੱਲੀ ਹੋਈ ਉਹਦੀ ਸਾਡੇ ਆਲਾ ਜੀ ਕਿਉਂ ਗਿਆ ਅੱਜ ਉਹਦੇ ਸਾਡੂ ਦੀ ਪਤਾ ਕਿਉਂ ਇਹ ਨਾ ਭੁੱਲੀ ਰਹੀ ਇਹਦਾ ਵੀ ਸਾਡੇ ਕੋਲ ਕੋਈ ਜਵਾਬ ਨਹੀਂ ਐ ਕਿਉਂ ਸਾਡੇ ਯਾਦ ਆਈ ਇਹ ਹੁਣ ਤੱਕ ਨਹੀਂ ਆਈ ਇਹਦਾ ਸਾਡੇ ਕੋਲ ਜਵਾਬ ਐਨਾ ਜਿੰਦਾ ਤੇਲ ਉੱਤਰ ਪਿਆ ਹੁੜੇ ਕਿਉਂ ਆ ਗਿਆ ਸਭ ਸਾਤ ਤੇਲ ਉੱਪਰ ਐਨਾ ਜਿੰਦਾ ਬਰੂਜ਼ ਪਿਆ ਤਾਂ ਪਹਿਲਾਂ ਹਮ ਤੇ ਕਿਉਂ ਆ ਗਿਆ ਸੀ ਬਰੂਜ਼ ਫਿਰ ਉੱਪਰ ਰੂਜ਼ ਉੱਪਰ ਆਇਆ ਉੱਥੇ ਨੂੰ ਲੱਗ ਗਿਆ ਖਥਿਆਰ ਬੜੇ ਜੁਗਾ ਹੋਏ ਤੇ ਬੁੱਦੇ ਭਰੇ ਸਾਰਾ ਪਰ ਉਹਦਾ ਲਿਖਿਆ ਹੋਇਆ ਸੀ ਮੈਂ ਤੁਹਾਨੂੰ ਦੁੜੇ ਨੂੰ ਮਰਵਾਈਏ ਕਿੰਨੇ ਉੱਪਰ ਵਾਈਏ ਤੇ ਇਹਨੂੰ ਬੂਦ ਤੇ ਇਹ ਜਦੋਂ ਪਤੀਲੇ ਦਾ ਟੱਕਣ ਹੋ ਭਾਵਰੇ ਚੱਕਦਾ ਉਹਦਾ ਧਿਆਨ ਗਿਆ ਵੀ ਇਹ ਕੀ ਗੱਲ ਜਦੋਂ ਚੱਕਦਾ ਤਾਂ ਚੱਕਿਆ ਭਾਵਰੇ ਦੂਜਾ ਕਿਹਾ ਧਲੇੜੇ ਪੇ ਭਾਵਰੇ ਕਿਹਾ ਤੇ ਕਰ ਫੇਕਿਆ ਫੇ ਧਲੇੜੇ ਪੇ ਵਾਰ ਹੋਇਆ ਤੇ ਇਹ ਕੀ ਗੱਲ ਇਸ ਨੂੰ ਗਿਆ ਫਿਰ ਪਤਾ ਗਿਆ ਉਹ ਤਾਕਤ ਹੈ ਹਿਰਦੇ ਤਾਕਤ ਤੇ ਫਿਰ ਕਾਬੂ ਲਈਏ ਹੋ ਗਿਆ ਗਿਆ ਇਹਨਾਂ ਬ੍ਰਹਮਾ ਪ੍ਰੈਸ ਬਣੇ ਬ੍ਰਹਮਾ ਪ੍ਰੈਸ ਉਹਦਾ ਕੀ ਹੁੰਦੀ ਸੀ ਉਹਨੂੰ ਬ੍ਰਹਮਾ ਪ੍ਰੈਸ ਬ੍ਰਹਮਾ ਉਹ ਜਿਹੜੀਆਂ ਗੱਣਾ ਵੱਧ ਹੁੰਦੇ ਸੀ ਇਹਦੀਆਂ ਆਪਣੇ ਰੂ ਦੀਆਂ ਗੱਣਾ ਇਧਰ ਪਾਣੀ ਹੈ ਵਿੱਚ ਪਾਣੀ ਇਧਰ ਵਜਨ ਰੱਖਤਾ ਇਧਰ ਉਹਦਾ ਵਜਨ ਅਤੇ ਛੋਟਾ ਮਤਲਬ ਹੈਗਾ ਉਹ ਤੇ ਬਜਟ ਜਿੰਨਾ ਰੱਖੋ ਲੋੜ ਹੈ 100 ਗੋਲ ਵਿੱਚ ਚਾਹੀਦੇ ਆਕਾਰ ਵੱਡਾ ਪਾਣੀ ਤੇ ਪਾਣੀ ਦੇ ਘਵਲ ਅੰਦਰ ਪ੍ਰੈਸ਼ਰ ਕੰਮ ਕਰਦਾ ਸੀ ਤੇ ਬ੍ਰੋਮੋ ਪ੍ਰੈਸ ਵੀ ਅੱਛਾ ਜੇ ਆਪਾਂ ਉਹਦੇ ਰੋਲਾ ਉਹ ਹੋਈ ਦੇ ਭਾ ਫੜਾ ਆ ਗਿਆ ਉਹਦੇ ਜੜਵੜ ਕੇ ਪ੍ਰੈਸ਼ਰ ਜੈਕ ਆਹ ਪ੍ਰੈਸ਼ਰ ਜੈਕਾ ਜੜੂ ਦੇ ਪਾਸੇ ਟਰਾਲੀ ਦੇ ਕੋਈ ਪੀਲ ਆ ਲੀਏ ਪ੍ਰੈਸ ਦੇ ਦੇਖੋ ਕੋਈ ਹੋਵੇ ਤੇ ਐਸ ਪਾਡੂ ਉਹਦੀ ਬਰੋਗੋ ਪ੍ਰੈਸ ਦੀ ਸੀ ਇੱਥੇ ਗੱਠਾ ਇੱਥੇ ਖੜੇ ਚ ਰੋਹੀ ਹੈ ਔਰ ਕੋਈ ਨਿੰਦ ਕਰਾ ਹੈ ਦਰ ਕੀ ਪ੍ਰਮ ਤਾਕਾ ਕਹਿਆ ਇੱਕ ਤਿੰਨ ਨਹੀਂ ਮੰਨਣਾ ਜਿਹੜਾ ਕੋਈ ਨਿੰਦ ਕਰਦਾ ਹੈ ਨਦਿਆ ਕਰਦਾ ਹੈ ਹਰ ਜਾਂਦੀ ਕਰਦੀ ਤਾਂ ਹਰਦੀ ਦਦਿਆ ਕਰਦੇ ਬਰਾਬਰ ਹੈ ਨਿੰਦਿਆ ਹੋਈ ਨਹੀਂ ਸਕਦੀ ਅਜ਼ਲ ਤੇ ਹਾਇ ਰੱਬ ਜੀ ਦਦੇ ਯੋ ਰੁਕਦੇ ਜੇ ਤੇ ਆਈ ਹੁੰਦੀ ਸੱਚ ਦੀ ਸੱਚ ਨੂੰ ਬੁਰਾ ਕਹਿਣਾ ਲੱਦਿਆ ਝੂਠ ਨੂੰ ਬੁਰਾ ਕਹਿਣਾ ਲੱਦਿਆ ਹੈ ਯਾਰ ਕਾ ਨੂੰ ਗਲਤੀ ਕਹਿਣਾ ਕਦੀ ਲੱਦਿਆ ਮੇਰੇ ਸਾਰੀਆਂ ਆਦਤਾਂ ਹੀ ਫੇਰ ਹੋ ਜਾਂਦੀ ਸਾਰੇ ਥਾਡੇ ਫੇਲ ਹੋ ਗਏ ਸਰਕਾਰਾਂ ਫੇਲ ਹੋ ਗਈ ਚੋਰ ਨੂੰ ਚੋਰ ਕਹਿਣਾ ਲੱਦਿਆ ਸਤਿ ਦੇ ਚੋਰ ਦੇ ਜੇ ਕੋਈ ਕਹਦੇ ਵੀ ਸਭ ਚੋੜ ਦੇ ਦਿਆਉ ਜੇ ਉਹਨੂੰ ਸੰਤ ਬਣ ਕੇ ਕੋਈ ਚੋਰੀ ਕਰ ਲਵੇ ਡਾਕਾ ਮਾਰ ਲਵੇ ਫਿਰ ਬੜੇ ਹਾਂ ਚਾਹੇ ਉਹਦੇ ਬਾਲਾ ਹਰ ਜਨਤੀ ਆਧਿਆਤਿਕ ਦਿਆ ਤੇ ਬੁਰਾ ਗਾਦੀ ਕਬੂਰਦੀ ਉਦਯੋਗਰ ਗਾਦੀ ਜੋ ਗੁਰੂ ਕਰਦੇ ਜੋ ਕਰ ਭਾੜੀ ਰਹੇ ਤੇ ਦਿਆ ਕੀਤੇ ਬੱਤਲ ਦੀ ਜੀਵ ਕਬੀਆ ਦਸਦੇ ਨੇ ਦਿਆ ਕੀਤੇ ਦਿਆ ਵੀ ਮੰਨਦੇ ਕੋਦਰ ਗਾਦੀ ਮੂਲ ਹੈ ਉਤੀ ਟਿੱਕਾ ਤੇ ਜਬ ਬਲੀਦਾਨ ਬੁਲੇਛਾ ਖਾਈ ਬੁਲੇਛਾ ਲਾ ਗਿਆ ਲਿਜਾਉਂਗਾ ਲੈ ਕੋਲ ਜੇ ਗਾਣੇ ਤੇ ਜੇ ਦਰਗਾਹ ਕਬੂਲਤ ਆਂ ਜੇ ਨਾ ਤੋੜ ਲਿਆ ਜਿਹੜੀ ਗੱਲ ਝੂਠੀ ਹੋ ਤੇ ਤੋੜ ਆ ਜਾਂਦਾ ਸੱਚ ਦਾ ਤੋੜ ਲੀ ਸੀ ਆ ਜਿਹੜੀ ਕੀ ਦਰਗਾਹ ਪਰਵਾਨ ਦੇ ਸੱਚੀ ਜਿਹੜਾ ਤੋੜ ਦਿੱਤੀ। ਦੀ ਗੋਸ਼ਟੀ ਦੀ ਵੀ ਇਹ ਤਾਂ ਤੋੜਾ ਬਾਕੀ ਗ੍ਰੰਥਾਂ ਦਾ ਤੋੜੇ ਆ ਗਿਆ। ਬਾਕੀ ਤੋੜ ਆ ਗਿਆ। ਇਹ ਤਾਂ ਇਹਦਾ ਤੋੜ ਨਹੀਂ। ਜਿਹੜੀ ਗੱਲ ਦਾ ਤੋੜ ਆ ਗਿਆ ਬੱਜੀ ਹੈ ਦਰਗਾਹ ਪਰਵਾਨ ਦੀ। ਉਹ ਹਰ ਕੋਈ ਦਾ ਕੱਲੋਂ ਬਾਣੀ ਦੀ ਮੋਹਰ ਲਾਉਣਾ ਚਾਹੁੰਦਾ ਉਹ ਗੱਲ ਕਰਕੇ ਬਾਣੀ ਵੀ ਐ ਕਹਿੰਦੀ ਆ ਮੈਂ ਹੁਕਮ ਉਹਨਾ ਪ੍ਰਭਪਤਿ ਇਹਨਾ ਚਿੱਤੇ ਵੀ ਜਿੱਤੀਆਂ ਬੁੱਧੀ ਕੰਮ ਕਰਦੀ ਆਪਣੀ ਸ਼ਾਨ ਤਸਤ ਆਪਣੀ ਅਗਲ ਰਾਣ ਦੂਜੇ ਨੂੰ ਸੁਝਾਉਣ ਦੀ ਕੋਸ਼ਿਸ਼ੀਆ ਆਪਣੀ ਅਗਲ ਤੋਂ ਕਮਿਊਨਿਟੀ ਇਸ ਕਰਕੇ ਕੰਮਤਾਜ ਕਮਯਾ ਰਹੇਗੇ ਜੇ ਕਮਲੀ ਦਹੀ ਹੈ ਤਾਂ ਬਵੇਗ ਨਹੀਂ ਹੈ ਦੁੱਧ ਤਾਂ ਬਵੇਗ ਕੋਈ ਨਹੀਂ ਜਦੋਂ ਬਵੇਗ ਤੋਂ ਪੂਰੇ ਹੋ ਅਸੀਂ ਸ਼ੁਰੂ ਕਰ ਲੈਣਾ ਰਜ਼ਾ ਹੈ ਬਵੇਗ ਤੱਕ ਤਾਂ ਪਹੁੰਚੇ ਜੀ ਬਵੇਗ ਤੋਂ ਦਪਾਈ ਉਦੋਂ ਪਹਿਲੇ ਹੀ ਤਰੰਤ ਸੱਜਰੇ ਸ਼ੁਰੂ ਕਰਦੇ। ਉਦੋਂ ਪਹਿਲੇ ਹੀ ਬੋਲੜਾ ਜੂ ਕਰਦੇ। ਉਹ ਗੱਲ ਕੱਚੀ। ਉਹਦਾ ਤੋੜ ਤਾਂ ਤੈਨੂੰ ਕਦੇ ਆਏਗਾ। ਕਿਉਂਕਿ ਉਹ ਵੀ ਧੀਵੀਂ ਛੇਤੀ ਆਜਵੇ। ਟਾਈਮਰ ਆਲ ਗਿਆ। ਮੂੜ ਨੂੰ ਪੈਨਾਨ ਦਾ ਉੜਦ ਸੱਜਰੇ। ਟਾਈਮਰ ਆਜੇ ਲੋ ਜਦੋਂ ਲੋਕ ਪਹਿਲੇ ਪਹੁੰਚਣਗੇ ਸਾਂਨੇ ਉੱਟਣਗੇ ਉਹ ਵਜੋਂ ਤੋੜ ਆ ਜਾਂਦਾ ਉਹਦਾ ਉਹ ਰੋਡ ਉੱਪਰ ਡਾ ਲੈਣਾ ਜਾਂ ਵੀ ਵਿਆਹ ਹੈ ਸਾਥੀ ਦਾ ਸਾਥੀ ਦੀ ਬਾਈ ਕੋਈ ਸਾਥੀ ਕੋਲ ਹਾਂ ਜੇ ਕੋਈ ਪਹੁੰਚੂਗਾ ਤਾਂ ਉਹ ਉਹ ਜਿ ਸਮਾਨ ਜਾਂਦਾ ਕਹਣੇ ਵਾਲੇ ਤੇਰੇ ਰਹੇ ਸਮਾਸ਼ ਵਿੱਚ ਉਹ ਕਾਜ ਲਈ ਸੱਚ ਉਹ ਸਾਡੇ ਦੇ ਕੋ ਬਹੁਤ ਲੋਕ ਹੈ ਇਹ ਗੱਲ ਸਹੀ ਹੈ ਸਾਦ ਸਿਆਣਪ ਛਾੜ ਇਹਾਂ ਨਾ ਇਸ ਕਰਕੇ ਇਹ ਆਦੇ ਤੁਸਾਂ ਛੱਡਦੇ ਆਪਣੀ ਜਿਹੜੀ ਸਿਆਣਪ ਹੈ ਤੇ ਤੈਨੂੰ ਤਾਂ ਲੱਗਦੀ ਹੈ ਬਹੁਤ ਬੜੀ ਥੋੜੂ ਪਾਰਟੀ ਦੇ ਵਿੱਚ ਅਸੀਂ ਕੜਵੀ ਭਰ ਜਾਂਦੇ ਕੜਵੀ ਭਾਗਤ ਪਾਰਟੀ ਸਪੂਤਰ ਉਧਰ ਕੀ ਹੋ ਉਧਾਲਾਂ ਦੀ ਦੁਰਤੀ ਆਉਦੀ ਹੈ ਕੋਈ ਸੁਦੋ ਚੋ ਬਰਤ ਗੜ ਮੈਂ ਤਾਂ ਵੀ ਨਹੀਂ ਪਰ ਚੋ ਭਾਵੇਂ ਬਰਤ ਜੋ ਭਲਾ ਤਾਂ ਕਰਕੇ ਆਉਂਦਾ ਆਪਣਾ ਹੀ ਉੱਡਾ ਕੇ ਉਹਨਾਂ ਦਾ ਫੁੱਲ ਹੋ ਗਿਆ ਉਹਦੇ ਸੱਪਾ ਉਹਦੇ ਖਤਰਾ ਜੀਦਾ ਉੜਾ ਰਹੇ ਗਿਆ ਜਿਹਦਾ ਹੁਣਾ ਰਹੇ ਗਿਆ ਲੰਗਰ ਰੋਟੀਆਂ ਲੈ ਮੁੱਖਾ ਤਾਂ ਉਹਦਾ ਭੁੱਖਾ ਉੱਠ ਖੜਿਆ ਜਿਹਨੂੰ ਕਹਿੰਦੇ ਬਾੜੀ ਦੀਦੀ ਸੰਤ ਦਾ ਗਿਆਨ ਬੁੱਧੀ ਪਹਿਲੇ ਦੀਦੀ ਹੈ ਬਾੜੀ ਦੀਦੀ ਹੈ ਤਾਂ ਕੀ ਕਰੂ ਕਿਹੜਾ ਜਿੱਦੜਾ ਪਾਟਾ ਹੋ ਕਿਸੇ ਦਾ ਉਹ ਨਾ ਫੁੱਲ ਹੋ ਗਿਆ ਉਹ ਠੀਕ ਆ ਤੇ ਬਸ ਉੱਚਾ ਸੁਧਰ ਵੀ ਹੋਈ ਗੱਲ ਹੈ ਤੇ ਆ ਵੀ ਉਹੀ ਗੱਲ ਉਹਦੀ ਆਪਣੀ ਕਪੈਸਿਟੀ ਇਸ ਕਰਕੇ ਥੋੜੀ ਕਪੈਸਿਟੀ ਆ ਇਹਨਾਂ ਨੂੰ ਸਾਰਾ ਅਧਿਕਾਰ ਲੈਣ ਲੱਗ ਦਿੱਤੇ ਜਿਹੜੇ ਦੂਏ ਸੀਗੇ ਸਦੋ ਗੋੜੀ ਦੇ ਗਰਤਰ ਕੋਈ ਰਿਆ वगैरह ਇਹਨਰ ਬਰਾਬਰ ਰਬਦਲਤੀ ਜਾਂਦੇ ਬਰਾਬਰ ਕੁਰਬਾਨੀਆਂ ਰਿਓ ਇਹ ਵੀ ਬਰਾਬਰ ਇੱਕੋ ਗੱਲ ਹੈ ਜੋ ਮੁਸਕਿਲ ਕਰਦਾ ਰਹੇ ਛੇਖਾ ਦੀ ਗਾਇਕੇ ਇਹ ਛਾਤੀ ਤੇ ਤੇ ਕੁਰਬਾਨੀ ਤੇ ਛਾਤੀ ਜਿਉਂ ਨਾ ਇਸ ਗੱਲ ਦੀ ਸਮਝ ਨਹੀਂ ਆਈ ਅਜੇ ਛਾਤੀ ਦੀ ਜਿਉਂ ਸਮਝ ਆ ਗਈ ਛੇਖਾ ਦੀ ਗੱਲ ਦਿੱਤਾ ਇਹਦਾ ਬਣਾ ਰੂ ਹੋਰ ਬੜੀ ਚੁੱਪ ਕੋਈ ਨਹੀਂ ਸੋ ਜਾਉਂਦੀ ਤਾਂ ਬਾਹਰ ਨੂੰ ਡਾਵਾ ਮੈਂ ਨਾਮ ਤੇ ਪਰ ਉਹ ਫੇਰ ਜਦੋਂ ਬਾਅਦ ਚ ਗੱਲ ਨਾਮ ਜਿਵੇਂ ਕੇ ਉਹ ਵੀ ਗਿਆ ਗਿਆ ਬਹੁਤ ਬਹੁਤ ਕਈ ਦੇਖੇ ਹੋਰ ਵੀ ਬਹੁਤ ਦੇਖੇ ਨੇ ਇਹ ਦਰਗਾਹ ਸੱਚ ਵੈਦ ਇੱਕ ਜਗ੍ਹਾ ਨਾ ਆਏ ਹੋ ਗਏ ਜਾਂਦਾ ਹੈ ਨਾ ਦਾ ਲੋ ਹੁੰਦਾ ਹੁੰਦਾ ਹੁੰਦਾ ਦਾ ਦਾ ਹੁੰਦਾ ਜੋਤ ਦਾ ਨਹੀਂ ਹੁੰਦਾ ਜਿੱਦਿਆ ਜੁੜੋ ਬੰਥਾਰੇ ਜੁੜਦਾ ਕੋਈ ਨਾ ਸੀ ਬਾਕੀ ਕਿੱਥੇ ਗਏ ਨੜਕੇ ਬਾਕੀ ਰੂਪ ਕਿੱਥੇ ਗਏ ਰੂਪ ਦਾ ਨਾ ਹੁੰਦਾ ਰੰਗ ਦਾ ਨੋ ਹੁੰਦਾ ਜਾਤ ਹੈ ਰੂਪ ਨੂੰ ਈ ਯਾਤਰਾ ਦਾ ਕਿਦੋਂ ਰੂਪ ਰੰਗ ਦਾ ਰੂਪ ਇਸ ਕਰਕੇ ਉਹਨਾਂ ਨੇ ਫਿਰ ਇਕੱਠਾ ਹੀ ਬੁਲਾ ਦਿੱਤਾ ਕਿ ਜੇ ਤੇਰਾ ਕੋਈ ਤੇ ਤੈਨੂੰ ਦੇਖਣ ਨਹੀਂ ਸਕਦਾ ਤੇ ਦਰਸ਼ਲੇ ਕਰਦੇ ਪ੍ਰੋਫੈਸਰ ਜੇ ਤੂੰ ਦੇਖਦਾ ਜੋ ਜਿੰਨਾ ਦਾ ਅਕਸ਼ਨ ਕਰਨਾ ਕਰੀ ਜਦੋਂ ਇਹ ਹਰ ਕਾ ਰੂਪ ਹੈ ਉਹ ਪੂਰਤੀ ਫਿਰ ਕੱਟੀ ਗਈ। ਕੱਟੀ ਗਈ ਤਾਂ ਕੱਟੀ। ਇੱਕ ਕੁੱਤਾ ਬੈਠਾ। ਉਹ ਬਾਹਰ ਬੈਠਾ। ਗੁਰਦੁਆਰੇ ਵੀ ਅਸੀਂ ਬੈਠਾ ਪੱਤ ਰੂਟ ਉੱਤੇ ਪੱਤੇ ਬਿਠੇ ਪੱਤੇ ਦੇ ਵਿੱਚ ਚੇਤਨ ਹੈ ਕੁੱਤੇ ਵਿੱਚ ਚੇਤਨ ਹੈ ਪਸ਼ੂ ਪੰਛੀ ਵਿੱਚ ਚੇਤਨ ਹੈ ਮੂਰਤੀ ਜੇ ਤਾਂ ਵੀ ਆ ਕੁੱਤੇ ਨੂੰ ਮੰਦਰ ਦੇ ਅੰਦਰ ਲੈ ਆਂਦੇ ਨੇ ਜੋੜੀ ਹੋਈ ਹੈ ਕਹਿੰਦੇ ਫ੍ਰੀਜ਼ ਰੋਟੀ ਭੰਨਦਾ ਹੈ ਈਆਨੇ ਪਤਾ ਲੀਆ ਆਪਣਾ ਨੇ ਦੋ ਰੋਟੀਆਂ ਕੁੱਤਾ ਲੈ ਕੇ ਜਾਣਾ ਦੇ ਦੀ ਹਾਂ ਕਹਿੰਦਾ ਦਾ ਤੌੜੇ ਤੇ ਚੱਕੀ ਭੇਜਿਆ ਜਾਵੇ ਬੀਜੀ ਅੱਗੇ ਉੱਡ ਨਾ ਅੱਛਾ ਕਈ ਵਾਰੀ ਇਹ ਨਹੀਂ ਕੱਟ ਜਾਂਦਾ ਲੈ ਕੇ ਫਿਰ ਮੂਰਤੀ ਦੇ ਵਿੱਚ ਹੁੰਨੀ ਆ ਬਾਈ ਰਾਤਾ ਲੈ ਜਾ ਨਾਲ ਕਹਿੰਦੇ ਫੋਟੋ ਚਾਕੇ ਮੋੜ ਭਜਦੇ ਉਹ ਕੁੱਤੇ ਚੀਰ ਦਰਸ਼ ਹੋ ਗਏ ਫਿਰ ਇਹ ਵੀ ਕਹਿ ਲੱਤ ਵੀ ਜਾਂਦੇ ਨੇ ਫਿਰ ਹੋਰ ਪਾਸੇ ਸਾਰੇ ਠੀਕ ਬਣ ਸਾਕੀ ਸਾਰੇ ਠੀਕ ਰੇਵੀ ਠੀਕ ਹੋ ਗਏ ਆਪਾਂ ਵਿਰੋਧੀ ਦੇ ਸਾਕੀ ਹੋਈ ਨਹੀਂ ਉਹ ਤੇ ਆਹੀ ਗੱਲ ਦੀ ਦੁੱਧ ਪੀ ਭਗਤ ਘੜਿਆ ਨਾਮੇ ਹਰ ਦਰਸ਼ਨ ਪਿਆ ਉਹ ਹੁਣ ਪੀ ਆਏ ਲਮਜੇ ਜਦੋਂ ਪਿਆ ਕੋਈ ਗਿਨੂ ਦਰਸ਼ਣ ਦਾ ਘਰ ਜਾ ਕੇ ਹੋਇਆ ਦੁੱਧ ਕਿਨੂੰ ਬਣਾਉਂਦਾ ਦਰਸ਼ਨ ਸਰੀਰ ਚਾ ਜੁੜ ਕੇ ਪੀਉ ਸਰੀਰ ਇਹਦੇ ਵੀਰਾਂ ਨਾਲ ਜੁੜ ਕੇ ਪੀਊਗਾ ਦੁੱਧ ਵੀ ਤਾਂ ਆਪੇ ਹਾਂ ਦੁੱਧਾ ਸਰੀਰ ਨਾਲ ਜੁੜ ਕੇ ਪੀਊਗਾ ਦੁੱਧ ਪੀਣ ਵੇਲੇ ਤਾਂ ਸਰੀਰ ਪਰ ਉਹ ਫਿਰ ਆ ਗਿਆ ਅੰਦਰ ਚਲਾ ਗਿਆ ਠੀਕੇ ਬਾਅਦ ਅੰਦਰ ਚਲਾ ਗਿਆ ਆਏ ਆ ਗਿਆ ਅੰਦਰ ਅਗਤ ਘਰ ਗਿਆ ਪੀ ਕੇ ਕਹਿੰਦਾ ਵੀ ਭਾਇਓ ਜਰਾ ਤਾਰਾ ਦੁੱਧ ਮੇਰੇ ਤੇਰਾ ਫਲਕ ਨਾ ਦੇਖਿਆ ਤਾਂ ਨਾ ਮੈਂ ਭਗਤ ਦੇ ਘਰ ਗਿਆ ਵਖਤ ਕਰ ਗਿਆ ਭਗਤ ਘਰ ਗਿਆ ਭਗਤਾਂ ਦਾ ਉਹ ਨਾਮ ਮਾਰਾ ਨਾਮ ਦੇ ਰੋ ਭਗਤ ਆਪੇ ਕਹੀ ਪੀ ਲੈ ਆਪੇ ਆਪੇ ਤਾਂ ਇਹ ਬੋਏ ਬੋਏ ਬੋਏ ਤੋਂ ਅੰਤਰ ਕਿਹਦਾ ਆ ਫਿਰ ਉਹ ਤੇ ਤਨ ਮਤ ਦੀ ਉਹ ਗੱਲ ਆ ਬੋਏ ਬੋਏ ਬੋਏ ਤੋਂ ਅੰਤਰ ਕਿਹਦਾ ਇਹ ਅਸਲ ਅੰਤਰ ਕਿਹਦਾ ਉਧਰ ਜੁੜੀ ਜਾਂਦੇ ਨੇ ਪਿੱਛੇ ਉਹ ਆ ਉਹ ਆਪਾਂ ਸਮੁੰਦਰ ਨੂੰ ਕਿਤੇ ਹੀ ਬਲੇਖਾ ਪੈਦਾ ਸੀ ਨੀ ਥੋੜਾ ਜਿਹਾ فرق ਆ ਥੋੜਾ ਵਰਕ ਦਾ ਦੋਏ ਫਰਕ ਆ ਨਾ ਜਦ ਤਾੜੇ ਗਏ ਤਾਂ ਫਰਕ ਦੱਸਦਾ ਹੈ। ਤਾੜ ਬਹੁਤ ਵੱਡਾ ਸਮਰੱਥ ਟਿਕਟ ਲੈ ਰਿਹਾ। ਸਮਰੱਥ ਨਹੀਂ ਹੈਗਾ। ਹਾਂ ਹੋ ਗਈ ਇੱਕ ਹੋ ਗਈ ਬਰਦਾਈ ਬਰੀ ਬਥੋਰੀ ਨਹੀਂ ਲਾ ਕਹਿੰਦਾ ਪਹਿਲਾ ਤਾਂ ਆ ਸਿਆਣ ਤੋਂ ਜਿਹੜੀ ਛੱਡ ਹੁੰਦੀ ਹੈ ਛੱਡਾ ਤੇ ਛੱਡਤੀ ਫਿਰ ਕੋਇਆ ਛੱਡ ਕੇ ਹੀ ਕੋਇਆ ਇੱਕ ਹੋ ਗਈ ਛੋਟਾ ਇੱਕ ਹੋ ਗਈ ਦਾ ਜਿਹੜਾ ਜਿਹੜੀ ਉਹਨਾਂ ਜਿੱਤਾ ਰਾਜ ਆ ਜਿੱਦਦਾ ਰਾਜਾ ਬੜਾ ਜਦਦਾ ਬਾਇਆ ਦੀ ਬੜਾਈ ਜੋ ਬੜਾ ਛੋਟਾ ਹੋਇਆ ਬਸ ਇੱਕ ਹੋ ਕੇ 10 ਬੰਦਾ ਦਾ ਬੜੇ ਦਾਸ ਬੰਦੂ ਦੀ ਬੜੇ ਦੇ ਵਿੱਚ ਹੀ ਕੁਝ ਬੜੇ ਦੇ ਵਿੱਚ ਸੀ ਸਭ ਕੁਝ ਗੜਬੜ ਬੜੇ ਦਾਸ ਹੋਇਆ ਆਉਂ ਤੇ ਵੀ ਲੱਭ ਗੁਰੇ ਵਰਤਿਆ ਗੁਰ ਚੇਲੇ ਕੀ ਸੰਧ ਬਣਾਈ ਐ ਗੁਰੇ ਵਰਤਿਆ ਉਹ ਗੁਰਾ ਚੇਲਾ ਹੋ ਕੇ ਕੋ ਹੈ ਉਹ ਗੁਰ ਰਣਕ ਲੈ ਕੇ ਆਏ ਗੁਰ ਵਰਤੇ ਗੁਰ ਤੇ ਅਮਰਦਾਸ ਅਰਬਦਾਸ ਕੋਈ ਇਹਨਾਂ ਨਾਲ ਗੁਰ ਬੜੀ ਲੱਗਿਆ ਰਹੇ ਅੰਦਾਜ਼ ਹੈ ਕਹਤੈ ਅੱਗੇ ਗੁਰਮੀ ਲਾਇਆ ਆ ਤੇ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਤੇ ਆਈ ਹੈ ਜਿਸ ਜੱਥੇ ਸਭ ਤੇ ਅਸਟੇ ਤੇਗਵਾਦਰ ਦੇ ਜਿਆਦਾ ਵਾਰ ਲੈ ਇਹਨਾਂ ਦੇ ਵਿੱਚ ਉਹਦੇ ਤਾਂ ਅੰਦਰ ਜਿਆਦਾ ਵਾਰਨ ਉਹ ਬਿੱਤਰ ਬੜਾ ਜਿਆਦਾ ਨੇ ਜਹਰ ਗੁਰੂ ਕਰਦੇ ਜਹਰ ਜਿਹੜਾ ਕਰਦੇ ਨੇ ਸਰ ਉਹਨੇ ਅੰਦਰੋਂ ਘੋਟੇ ਨੂੰ ਜਹਰ ਕਰਦੇ ਨੇ ਵੀ ਸਾਡੇ ਅੰਦਰੋਂ ਬਾਹਰ ਤੁਸੀਂ ਹੈਗੇ ਨਹੀਂ ਇਹ ਤੁਹਾਡੇ ਨਾਲ ਇਹ ਉਹ ਕਦਮ ਉਹ ਅੰਤਰੀਏ ਪ੍ਰਯੋਗ ਹੋਵੇ ਤਾਂ ਫਾਲੀ ਨੂੰ ਦਰ ਕੋਲ ਆਸ ਤੇ ਉਹ ਫਲਰ ਕੇ ਕੱਖ ਕਰਦਾ ਜਿਵੇਂ ਤੁਹਾਡੇ ਅਸਰ ਕਰਦੇ ਬੜੀ ਤੇ ਜੇ ਜਦੋਂ ਬੰਨ ਦੀ ਗੱਲ ਕਰੋ ਫਿਰ ਤਾਂ ਗੱਲਾਂ ਨਹੀਂ ਕਮਾਈ ਬੁਰੀ ਲੱਗਦੀ ਲੱਗਦੀ ਗੱਲਾਂ ਹੀ ਨਾ ਨੂੰ ਗੱਲਾਂ ਹੀ ਦੱਸਦਾ ਕਮਾਈ ਦੀ ਗੱਲ ਕਮਾਈ ਤਾਂ ਬਰ ਉਹ ਹੈ ਨਾ ਇਹ ਇਕੱਠੇ ਕਰਦੇ ਕਮਾਈ ਹੋਇਆ ਯੋ ਕੰਮ ਜਿਗਰ ਜਿਹੜੇ ਕਰਦੇ ਉਹਨੂੰ ਮੰਨ ਕੋਨੂੰ ਕੋਈ ਕਹਿੰਦੇ ਅੱਛਾ ਉਕਤਿਆ ਸਿਆਣਪ सगਲ ਤਿਆਰ ਨਾਲ ਲਏ ਸਮਾਏ ਜੇ ਸਿਆਣਪ ਨੂੰ ਬੁਤਤ ਸਰਦ ਤੇ ਫਿਰ ਸਵਾਲ ਹੈ ਸਰਦ ਜੇ ਆਪਣੇ ਬੁਲਾਲ ਜਿਹਾ ਹੋ ਸਾਨ ਕ ਲੈ ਸਮਾਏ ਜਿੰਨਾ ਚਿਰ ਸਿਆਣਪ ਨਹੀਂ ਛੱਡਦਾ ਸਮਾਏ ਜਸ ਬਰਫ ਸਰਦੋ ਦੁੱਧ ਵਿੱਚ ਅਡ ਪਈ ਰਹਦੀ ਹੈ ਜੇ ਇਹ ਢੜੀ ਜਾਂਦੀ ਆ ਤਾਂ ਇਹ ਦੁੱਧ ਵਿੱਚ ਪਾਣੀ ਦੇ ਬਰਫ ਦੀ ਬਰਫ ਦੀ ਦੇ ਜੇ ਹੋਂਵਰ ਦਾ ਨਹੀਂ ਜੇਦੀ ਪਰ ਹੌਲੀ ਛੱਟਦਾ ਪਰ ਹੌਲੀ ਦੇ ਛੱਟ ਵੱਜ ਜੇਵੇ ਤਾਂ ਹੀ ਕਹਿੰਦਾ ਵੱਜ ਕੇ ਰਹਿੰਦੇ ਜਾਂ ਘਰ ਖਾਨੇ ਦੇ ਹੈ ਹੋਈ ਬਾਣੀ